ਜਈਏ ਜਨਮ ਨਾ ਹੋ ਵੀ ਕਦ ਹੀ ਜੇਕਰ ਸੱਚ ਪਛਾਣਾ ਗੁਰਮੁਖੀ ਅੱਖ ਹੈ ਗੁਰਮੁਖੀ ਬੂਝ ਹੈ ਗੁਰਮੁਖੀ ਕੋ ਜਾਣੈ ਕੱਲ ਬੱਬਾ ਨਾਲ ਉਹ ਜਿਹੜਾ ਸੀਗਾ ਉਹਦੇ ਤੇ ਤੁਹਾਨੂੰ ਇਹ ਲੱਗਦਾ ਸੀ ਜਿਵੇਂ ਕਿ ਤੇ ਕੋਈ ਪੂਰੀ ਰੋਸ਼ ਢੜੀ ਪਈ ਸੀਰ ਤੇ ਤੁਹਾਨੂੰ ਕੱਲ ਲੱਗਦਾ ਮੰਮੇ ਮੋ ਦੋ ਤਿੰਨ ਵਾਰ ਕਿਹਾ ਫਿਰ ਬੱਬਾ ਇਹਨਾਂ ਲੱਭਦਾ ਹੈਗਾ ਅਸਲ ਦੇ ਵਿੱਚ ਬੱਬ ਮੱਮੋ ਲੱਗ ਜਾਗਾ ਬੱਬ ਬੱਬ ਉਚਾਰਤ ਭਿਆ دیਵਾਨਾ ਬੱਬ ਦਾ ਅਰਥ ਹੁੰਦਾ ਮੈਂ ਕਿ ਬੱਬ ਮੈਂ ਮੈਂ ਜੋਤ ਦੇ ਲੈਵਲ ਦੀ ਮੈਂ ਇਹ ਸਰੀਰ ਦੇ ਲੈਵਲ ਦੀ ਮੈਂ ਚਲੋ ਸਰੀਰ ਦੇ ਲੈਵਲ ਦੀ ਕਈ ਮੈਂ ਸਮਝਦੇ ਬੱਬ ਬੱਬ ਤੋਂ ਹੀ ਬੱਬਤਾ ਬਣਿਆ ਬੱਬ ਤੋਂ ਹੀ ਬੱਬਾ ਬਣਿਆ ਜਿਹੜਾ ਇਹਦਾ ਬੱਬਾ ਲੱਗਦਾ ਉਹ ਜੋਤ ਵਾਸਤੇ ਆਇਆ ਡਰਾਕਾਰੀ ਸਰੂਪ ਵਾਸਤੇ ਆਇਆ ਉਹ ਬੱਬਾ ਅਖਾਰ ਹੈ ਬੱਬਾ ਸ਼ਰੀਰ ਦੀ ਹੈ ਬਸ ਹੂੰ ਆਇਆ ਭੀਤਰ ਅਬਰੋ ਪੜਿਆ ਮੰਮਾ ਅਖਰ ਵਿਸਰਿਆ ਮੈਂ ਅਖਾਰਾਂ ਹੈ ਵਿਸਰ ਗੱਲ ਜਾਦਾ ਹੋਰ ਕੋਈ ਪੜ ਲਿਆ ਤਾਂ ਮੈਂ ਸ਼ਰੀਰ ਬਣ ਗਿਆ ਐਸੀ ਪੜਾਈ ਪੜ ਲਈ ਇਹ ਹਰ ਹੈ ਨਹੀਂ ਕਹਿੰਦਾ ਮੈਂ ਤਾਂ ਉਹ ਤੇਰੇ ਕੋਲ ਦੀ ਉਹਨੂੰ ਗਿਆ ਉਹ ਬੱਬਾ ਤੈਨੂੰ ਦਿਖਾਇਆ ਕਿਉਂ ਨਹੀਂ ਬੱਬਾ ਸ਼ਰੀਰ ਬਣ ਗਿਆ ਬੱਬਾ ਤਾਂ ਦੇਖਣ ਦੀ ਚੀਜ਼ ਹੈ ਉਹ ਦੀ ਇਹ ਪੜਾਈ ਪੜ ਲਈ ਸੰਸਾਰ ਚ ਹੋ ਗਈ ਬਸ माया मण के जे मम्मा निराकार स्वरूप वासे है निराकार स्वरूप बब्बा भास ग्रास मेरा सब तो पहला जेड़ा ग्रास होया भास होया ओ भास की हुंदा दूध भास है जे डॉक्टर इ तो तुसी पूछो पूछ लेओ डॉक्टर तो तो दूध कीयां ਜਿਹੜਾ ਦਰਗਾਹ ਪਹਿਲਾਂ ਗਰਾਸ ਮਿਲਿਆ ਉਹ ਬਾਸ ਐਸੀ ਦਾ ਪੇਟ ਵਿੱਚ ਪੇਟ ਵਿੱਚ ਪਹਿਲੀ ਗਰਾਈ ਪੇਟ ਵਿੱਚ ਜਿਹੜਾ ਗਰਾਸ ਮਿਲਿਆ ਉਹ ਤੋਂ ਹੀ ਬਾਸ ਬਣਿਆ ਉਹ ਉਹੀ ਰਸ ਸੀ ਜਿਹੜਾ ਹੁਣ ਹੱਜ ਬੋ ਕੇ ਜਾਂਦੀ ਸਾਰੇ ਸਾਡਾ ਬਾਸ ਬਣ ਜਾਂਦਾ ਰੂਪੇ ਬਦਲਿਆ ਹੋਇਆ ਜੇ ਬਾਸ ਖਾਦਾ ਤਾਂ ਬਾਸ ਬਣਿਆ ਬਾਸ ਕਿੱਥੋਂ ਆਇਆ कौन मास ਕੌਣ ਸਾ ਕਹਾਵੇ ਸਾਗ ਸਬਜ਼ੀਆਂ ਵੀ ਬਾਸ ਨੇ ਜਿੱਤੇ ਆਤਮਾ ਹੁੰਦੀ ਹੈ ਉਹਦੀ ਜਿਹੜੀ ਦੇਹ ਹੁੰਦੀ ਹੈ ਉਹ ਬਾਸ ਹੈ ਹੁੰਦਾ ਚਾਹੇ ਆਲੂ ਹੋਵੇ ਚਾਹੇ ਗੋਭੀ ਹੋਵੇ ਚਾਹੇ ਗਾਜਰ ਹੋਵੇ ਚਾਹੇ ਸਿਓ ਹੋਵੇ ਚਾਹੇ ਕੇਲਾ ਹੋਵੇ ਚਾਹੇ ਅੰਬੂਦ ਹੋਵੇ ਚਾਹੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਵਿਆਪਕ ਦ੍ਰਿਸ਼ਟੀਕੋਣ ਤੋਂ ਪੂਰੀ ਅਕਲ ਦੇ ਹਿਸਾਬ ਨਾਲ ਸਭ ਆਸ ਹੈ ਕਟਕ ਵਾਲਿਆਂ ਦਾ ਕੋਈ ਬਾਸ ਹੈ ਕੋਈ ਸਬਜੀ ਹੈ ਕੋਈ ਦਾਲ ਹੈ ਕੋਈ ਕੁਛ ਹੈ ਕੋਈ ਕੁਛ ਜਿਹੜੇ ਆਦਮੀਆਂ ਨੇ ਇੱਕੋ ਜੋਤ ਇੱਕੋ ਮੁਠੀ ਦੇ ਭਾਂਡਿਆਂ ਨੂੰ ਚਾਰ ਬਰਡ ਬਣਾ ਲਏ ਸੀ ਉਹwidetilde ਉਹਨਾਂ ਨੇ ਜਦ ਬਾਸ আর ਦਾਲ ਸਬਜੀ ਬਣਾ ਉਹ ਇੰਦੀ ਅਕਲ ਦੇ ਬਾਲ ਕਰ ਰਹੇ ਹੋ ਇਹ ਕੋਈ ਜੀ ਦੀਆਂ ਕਈ ਵੈਰਾਈ ਵੈਰਾਈਆਂ ਬਣਾ ਲਏ ਨੇ ਉਹਨਾਂ ਦੀ ਆਪਣੀ ਅਕਲ ਹੈ ਥੋੜੀ ਅਕਲ ਦਾ ਹੈ ਉਹਨਾਂ ਦੀ ਘਟ ਅਕਲ ਦੀ ਨਿਸ਼ਾਨੀ ਹੈ ਘਟ ਗਿਆ ਦੀ ਨਿਸ਼ਾਨੀ ਉਹ ਗੁਰਬਾਣੀ ਰੱਦ ਕਰਦੀ ਹੈ ਗੁਰਬਾਣੀ ਦਾ ਦਾਇਰਾ ਬਹੁਤ ਵਿਸ਼ਾਲ ਹੈ ਇਹ ਇੱਕ ਤੇ ਸਭ ਜਗ ਉੱਪ ਸਭ ਜਲ ਉਪਜਿਆ ਫੇੜ ਪੌਦੇ ਵਿੱਚ ਹੀ ਆ ਗਏ ਪਸ਼ੂ ਪੰਛੀ ਵਿੱਚ ਹੀ ਆ ਗਏ ਜੱਗ ਦੇ ਵਿੱਚ ਜੱਗ ਰਚਣਾ ਸਭ ਝੂਠ ਹੈ ਤੇ ਆਦਮੀ ਗੱਲ ਹੈ ਗੁਰਬਾਣੀ ਆਦਮੀ ਇਕੱਲੇ ਦੀ ਗੱਲ ਕਰਦੀ ਨਹੀਂ ਹੈ ਸਾਰੇ ਜੱਗ ਨੂੰ ਲੈ ਕੇ ਚਲਦੀ ਹੈ ਇਕੱਠਾ ਜਦ ਕਿ ਉਪਦੇਸ਼ ਆਦਮੀ ਨੂੰ ਇਕੱਲੇ ਨੂੰ ਗੁਰਬਾਣੀ ਜੱਗ ਨੂੰ ਕਿਉਂ ਲਵੇੜ ਕੇ ਚਲਦੀ ਹੈ ਗੁਰਦਾਸ ਜੀ ਨੂੰ ਉਪਦੇਸ਼ ਕਰਨਾ ਸੀ ਜੇ ਸਾਰੇ ਜਗ ਨੂੰ ਡਾਕੇ ਨਹੀਂ ਚਲਦੀ ਤਾਂ ਗਿਆਨ ਹੋਣਾ ਹੀ ਨਹੀਂ ਫਿਰ ਉਹਨਾਂ ਵਾਲਾ ਗਿਆਨ ਤੁਹਾਡੇ ਜਾਣ ਹੋਈ ਦੀ ਸਾਫ ਹੋਣੀ ਨਹੀਂ ਜੋ ਭਲੇਖੇ ਪਾਇਦੇ ਦੂਰ ਹੋਣੀ ਨਹੀਂ ਮਾਸ਼ਾਹਲਾ ਭਲੇਖਾ ਦੂਰ ਹੋਣਾ ਹੀ ਨਹੀਂ ਸੀ ਤੁਹਾਡਾ ਉਹ ਜਿਹੜੀ ਚਾਲਾ ਭਲੇਖਾ ਦੂਰ ਹੋਣਾ ਹੀ ਨਹੀਂ ਸੀ ਤੁਹਾਡਾ ਉਹਨਾਂ ਨੇ ਬੇਸ ਤੋਂ ਰਹਿ ਕੇ ਚੱਲੇ ਹੋਏ ਜਿੱਤੋਂ ਚੀਜ਼ ਸਟਾਰਟ ਹੋਈ ਹੈ ਉੱਤੋਂ ਲੈ ਕੇ ਚੱਲਿਆ ਸਾਰੇ ਇੱਕੋ ਰੂਰ ਇੱਕੋ ਖੇਤ ਕਣਕ ਆ ਗਈ ਬੜਲੇ ਕੋ ਤਲਾਵਾ ਲੱਗਿਆ ਕੁਝ ਜੱਟ ਦੇ ਘਰ ਚਲੇ ਗਈ ਜੀ ਵੀ ਖੇਤ ਹੈ ਕਿਸਾਨ ਉਹਦੇ ਘਰ ਚਲੇ ਗਈ ਕੁਝ ਬੇਇੱਜ਼ਤੀ ਕਿਸੇ ਕਿਸੇ ਦੇ ਘਰ ਚਲੇ ਗਈ ਕਿਉਂ ਫੇਰ ਉਹਦੇ ਦੀ ਰੋਟੀ ਉੱਚੀ ਨੀਂਝ ਕਿਉਂ ਹੋਗੀ ਉਸੇ ਗੜਕ ਦੀ ਰੋਟੀ ਆ ਜੋ ਪੱਕੀ ਹੋਈ। ਉਸਰ ਬੰਦ ਦਾ ਹੱਥ ਲੱਗਿਆ ਫਿਰ ਜ਼ਹਿਰ ਚੜ ਗਿਆ ਉਹਨੂੰ। ਦਾ ਹੱਥ ਲੱਗਿਆ ਸਰੇਸਟ ਹੋ ਗਿਆ। ਕੀ ਸੋਚ ਹੈ? ਇਹ ਸੋਚ ਇਹ ਸੋਚ ਹੈ ਕਾਨੂੰਨ ਹੈ। ਇਹ ਅੰਦੀ ਸੋਚ ਹੈ ਕਾਨੂੰਨ ਦੀ ਅੰਦੀ ਸੋਚ ਹੈ। ਵਿਚਾਰ ਬੀ ਅਲੀ ਸੋਚ ਵਿਚਾਰ ਤੋਂ ਸਖੜੀ ਸੋਚ ਵਿਚਾਰ ਤੋਂ ਸਖੜੀ ਹੈ ਸਾਰੀ ਗੱਲ ਸਾਰੇ ਧਰਬ ਵਿਚਾਰ ਤੋਂ ਸਖੜੇ ਰਹੇ ਕਿਹੜੇ ਇਦੋਂ ਸੋਝਦੇ ਇਹਨਾਂ ਦੀ ਸੋਝ ਹੈ ਧਰਤੀ ਹੋਈ ਹੈ ਕੋਈ ਇੱਥੇ ਲੱਗਿਆ ਹੋਇਆ ਹੈ ਇਹਦਾ ਨੀਝ ਪਾਣੀ ਪੀਣੋ ਥੱਲੇ ਦਾ ਤੁਹਾਡਾ ਪਸੰਦ ਦੇ ਕੋਨਕ੍ਰੀਟ ਤੱਤੀ ਬਠਨੀ ਉੱਦੀ ਉੱਥੇ ਉਹ ਖੜੇ ਨੇ ਉੱਥੇ ਉਹ ਖੜੇ ਨੇ ਧਰਤੀ ਦਾ ਇੱਕੋ ਜੁੜੀ ਹੋਈ ਹੈ ਬਸ ਮੰਨ ਲਈ ਮਰਿਆ ਦਾ ਬਣਾ ਲਈ ਆਪਣੀ ਜੇ ਤਾਂ ਤੇ ਮਾਰ ਖੜਦਾ ਲਿਆ ਕੋਈ ਗੱਲ ਬੇਥਲੀ ਹੱਥ ਝੂਠੇ ਹੋ ਗਏ ਇੱਥੇ ਤੇ ਧੋਲੇ ਸੱਚੇ ਹੋ ਗਏ ਆਖਾ ਦੇ ਨਹੀਂ ਦੋ ਤੱਕ ਤੇ ਨਾਲੇ ਜੜਿਆ ਹੋਇਆ ਫਿਰ ਇਤੋਂ ਗਾਂ ਵੀ ਜੜਿਆ ਹੋ ਹਰ ਵਾਰ ਢੋਲ ਨਹੀਂ ਪਾਊਗਾ ਉਨਾ ਕਰ ਲੋ ਜਿੰਨਾ ਕਰ ਸਕਦੇ ਹੋ ਬਾਕੀ ਛੱਡ ਦਿਓ ਜਿੰਨਾ ਸਾਡੀ ਮਰਜ਼ੀ ਉਹਨਾਂ ਗਲਤ ਮੰਨੋਗੇ ਉਹ ਸਾਡੀ ਮਰਜ਼ੀ ਹੈ ਬਰਿਆਦਾ ਮਰਜ਼ੀ ਦਾ ਲੋ ਹੈ ਇਸ ਕਰਕੇ ਬਲਜੀਤ ਸਰੂਵੇ ਕਹਾਂਦੇ ਬਰਿਆਦਾ ਮਰਿਆਦਾ ਬੈਂਡ ਹੁੰਦੀ ਹੈ ਮੈਂਨ ਜੋ ਚੀਜ਼ ਆ ਉਹ ਹਮੇਸ਼ਾ ਝਗੜਾ ਰਹੂਗਾ ਹੀ ਰਹੂਗਾ ਇਹ ਗॉड ਹੈ ਗॉड ਗਿਫਟ ਹੈ ਮਰਬਾਨੀ ਰਹਿਤ रहत ਦਾ ਸਬੰਧ आत्मा ਨਾਲ ਹੁੰਦਾ ਆਤਮਾ ਨਾਲ ਹੁੰਦਾ ਸਭ ਕੁਝ ਜਾਣੇ ਆਤਮਕੀ ਰਹਿਦ ਰਹਿਦ ਦਾ ਸਬੰਧ ਆਤਮਾ ਨਾਲ ਬਰਿਆ ਦਾ ਸਬੰਧ ਸਰੀਰ ਨਾਲ ਅਰ ਬਾਇਆ ਨਾਲ ਸੰਸਾਰ ਨਾਲ ਸੰਸਾਰ ਤਾਂ ਯਾਨੀ ਸੰਸਾਰ ਦੋ ਰਸੀ ਲੈ ਲਈ ਇੱਕ ਸੰਸਾਰ ਵਾਲੀ ਲੱਜ ਲੈ ਲਈ ਇੱਕ ਡਰਾਗ ਵਾਲੀ ਲੈ ਲਈ ਧੋਏ ਰਹਿਤ ਬਰਿਆਦਾ ਵਾਲਾ ਛਟਕਾਰਾ ਹੀ ਨਹੀਂ ਹੋ ਸਕਦਾ ਸਵਾਲ ਰਹੀ ਪੈਦਾ कि ਹੋ ਜੇ ਛਟਕਾਰਾ ਜਿੰਨਾ ਜਰ ਬਰਿਆਦਾ ਵਾਲੀ नहीं ਲਾ ਕੇ ਪਰੇ ਦੀ ਵਾਰ ਦੇ ਭਗਾ ਕੇ ਨਾ ਕਲੀ ਰਹਿਤ ਵਾਲੀ ਨਹੀਂ ਰਸਦੇ ਰਹਿਤ नहीं ਮੁਝ ਕੋ ਗਿਆ ਬਰਿਆਦਾ ਪਿਆਰੀ ਮੁਝ ਕੋ ਨਹੀਂ बुरी अदा परलतरू है तूरू पे है बुरा अदा गुरु रूप प्यारी रहत है सिख भी प्यारा नहीं रहत पहरी है जे रहत नहीं तो सिख है नहीं ये गल चल रही है उधर रोज रने रहे नहीं है तो सिख कादा जो बाणी बन्नी हो नहीं है ਬਾੜੀ ਦੇ ਚੱਲਦਾ ਹੀ ਨਹੀਂ ਹੈ ਗੁਰਬਾੜੀ ਤੇ ਤੇ ਸਿੱਖ ਕਰਦਾ ਜੇ ਗੱਡੀ ਲਈ ਤੇ ਹੀ ਖੜੀ ਹੋ ਟੇਰ ਕਾਦੀ ਹੈ ਉਹ ਕਾ ਪਰੇ ਕਰ ਦਿੰਦੇ ਉਹਦੇ ਨੇ ਜੇ ਚੱਲਣ ਦੇ ਕਾਬਲ ਰਹੇ ਉਹ ਨੂੰ ਲਈ ਪਰੇ ਹਟਾ ਦਿੰਦੇ ਇਹ ਤਾਂ ਚੜ ਜਾ ਚੜ ਜਾ ਚਾੜੀ ਬੁਗਤੇ ਦਵਾਰਾ ਲਈ ਤੇ ਫਿਰ ਚੜ ਗਏ ਆ ਕੇ ਲਈ ਛੱਡ ਗਏ ਸੀ ਲੋ ਇਹ ਚੜ ਗਏ ਪਰਮਾਨਦੇ ਚਲੋ ਇਹ ਤਾਂ ਉਲਟੇ-ਪਲਟੇ ਗਏ 100 ਪੈਰੇ ਡਬੇ ਹਜ਼ਾਰਾਂ ਕੋਹਾਂ ਲਈ ਤੇ ਬਰੇ ਕਹੇ ਜਾਂਦੇ ਤੁਸੀਂ ਸਿੱਖਾ ਹਜ਼ਾਰਾਂ ਕੋਹਾਂ ਦੂਰ ਪੈਰੇ ਸਿੱਖੀ ਤੇ ਹਜ਼ਾਰਾਂ ਕੋਹਾਂ ਦੂਰ ਹਜ਼ਾਰਾਂ ਕੋਹ ਜਦੋਂ ਘੁਰਮਤ ਨਹੀਂ ਗਿਆਨ ਹੈ ਨਹੀਂ ਦੂਰ ਵੀ ਹੋ ਰਹੇ ਜਿਨ੍ਹਾਂ ਨੂੰ ਜਿਹੜੇ ਸਿੱਖ ਵੱਡਣਾ ਚਾਹੁੰਦੇ ਨੇ ਉਹਨਾਂ ਨੂੰ ਦੂਰ ਕਹਾਂਗੇ ਅਸੀਂ ਦੂਰ ਹੋ ਜਾਈ ਸਿੱਖ ਵੱਡਣਾ ਚਾਹੁੰਦੇ ਨੇ ਉਹ ਵੀ ਚਾਹੁੰਦਾ ਦੀ ਹਜ਼ਾਰਾਂ ਕਹਾਂ ਦੂਰ ਸੀ ਗੁਰੂ ਅਮਰਦਾਸ ਹਜ਼ਾਰਾਂ ਕਹਾਂ ਦੂਰ ਸੀ ਇਹ ਤਾਂ ਲੰਦਣਾ ਗੁਰੂ ਘਰ ਚ ਆਇਆ ਤਾਂ ਆਇਆ ਪਤਾ ਹੀ ਨਹੀਂ ਸੀ ਗੱਲ ਦਾ ਉਹ ਜਿਹਦਾ ਪਤਾ ਨਾ ਹੋਵੇ ਹਜ਼ਾਰਾਂ ਕੋਹੋਂ ਦੂਰ ਦਾ ਮਤਲਬ ਇਹੀ ਹੈ ਜਿਹਦਾ ਗਿਆਨ ਨਹੀਂ ਹੋਵੇ ਆਪਨ ਜਿਵੇਂ ਕਿਦਾ ਗਿਆਨ ਨਹੀਂ ਹਜ਼ਾਰਾਂ ਕੋਹੋਂ ਦੂਰ ਨਾ ਚਾਹੇ ਅਸੀਂ ਅੰਦਰੋਂ ਸਿੱਖ ਵੱਡੋ ਚਾਹਦੇ ਵੀ ਹਾਂ ਉਹ ਹਜ਼ਾਰਾਂ ਕੋਹੋਂ ਦੂਰ ਨੇ ਜਿਹੜੇ ਬਰੋਚ ਖੜੇ ਨੇ ਬਰੇ ਆੜਾ ਜਾਣ ਕੇ ਜਿਹੜੇ ਥੋੜਾ ਬੋੜਾ ਜਾਣ ਕੇ ਵੀ ਵਿਰੋਧ ਕਰਦੇ ਨੇ ਛੱਡਣਾ ਨਹੀਂ ਉਹ ਉਹਨਾਂ ਦੀ ਜਗ੍ਹਾ ਨੇ ਜੀਰ ਰਸੀ ਦਰਬ ਸਾਕਤਾਂ ਲਈ ਜਾਨੇ ਉਹ ਸਾਕਤਾਂ ਲਈ ਸਾਰੇ ਸਾਕਤ ਬਰੇ ਸੰਸਾਤ ਸਭੀ ਸੰਤ ਉਹ ਵੜਨਗੇ ਜਿਹਨਾਂ ਦੇ ਅੰਦਰ ਇੱਛਾ ਹੈਗੀ ਹੈ ਸਿੱਖ ਬਣਨ ਦੀ ਪਰ ਉਹਨਾਂ ਨੂੰ ਪਤਾ ਹੈ ਪਤਾ ਲੱਗੂਗਾ ਉਹ ਸਿੱਕੇ ਅਡਾਪਟ ਕਰੀ ਜਾਂਗੇ ਜਿੰਨਾ ਜਿੰਨਾ पता ਲੱਗੂਗਾ ਅਡਾਪਟ ਕਰੀ ਜਾਂਗੇ ਉਹਨਾਂ ਨੂੰ ਅਸੀਂ ਹਜ਼ਾਰਾਂ ਕੋਹ ਦੂਰ ਕਹਿ ਸਕਦੇ ਬੰਦੀ ਸਪੀਡ ਹੋ ਜਾ ਐਡੀ ਹੈ ਲਾ ਜਾਣਾ ਲੱਖਾਂ ਕੋਹ ਦਾ 10 ਘੰਟਾ ਇਹ ਤੈ ਕਰ ਲੈ ਤੇ ਇਹ ਸਪੀਡ ਬਹੁਤ ਹੈ ਬੰਦੀ ਐਡੀ ਤੇਜ਼ ਸਪੀਡ ਆ ਜਾਣਾ ਲੱਖੋ ਕੋਹ ਦਾ ਫਾਸਲਾ ਇਸ ਘੰਟਾ ਤੈ ਕਰ ਲੈ ਜੇ ਮੰਨ ਜੇ ਟੱਕਾ ਟੱਕਾ ਕਰਦਾ ਰਿਹਾ ਗੱਡੀ ਆ ਕੇ ਖੜੀ ਪਲੇਟਫਾਰਮ ਤੇ ਤੇ ਚੜ ਚੜ ਗਿਆ ਫਸਲਾ ਟਾਈਮ ਹੋ ਗਿਆ ਤੇ ਨਾ ਚੜਿਆ ਤਾਂ ਪਲੇਟਫਾਰਮ ਤੇ ਖੜੇ ਹੀ ਰਹਿ ਗਿਆ ਬੇੜੇ ਤੇ ਜਿਹੜਾ ਚੜੂਗਾ ਪਾਰ ਹੋਈ ਲੱਗੂ ਚੜਨ ਵੇਲੇ ਜਿਹੜਾ ਸਲਾਹਾ ਕਰੀ ਜਾਊਗਾ ਸਲਾਹਾ ਕਰਤਾ ਉਹ ਰਹਿ ਜਾ ਰਹਿ ਉੱਥੇ ਖੜਾ ਰਹੂਗਾ ਇਹ ਇਹ ਜਨਮਨਾ ਹੋ ਵੀ ਕਦੇ ਹੀ ਜੇਕਰ ਸੱਚ ਪਛਾਣਿਆ ਜੇਕਰ ਸੱਚ ਨਾ ਅਗਲਾ ਜੜਬਟੀ ਦੁੱਤ ਜਾਣਾ ਆਉਣਾ ਕਿਤੇ ਨਹੀਂ ਉਹ ਅਸਤਾ ਬਗਨ ਲਈ ਜਿੱਤੇ ਕਲਜਗਤ ਸੱਜੂ ਹੋ ਜਾਣ ਇੱਕ ਘੜੀ ਦਾ ਮਿਲਤੇ ਕਲਜਗਤ ਹੋਤਾ जिन्ना ਆ ਜਨਮੇ ਮਿਲਿਆ रहा ਸੀ ਕਾਲਯੁਗ ਹੈ ਨਹੀਂ ਸੀ ਕੋਨਾਂ ਜਰ ਫਿਰ ਕੀ ਸੀ ਸੱਜੁਗ ਸੀ ਤ੍ਰੇਤਾ ਦਵ ਪਰ ਨਹੀਂ ਹੋ ਸਕਦਾ ਤ੍ਰੇਤਾ ਦਵ ਪਰ ਹੀ ਹੁੰਦਾ ਕਾਲਯੁਗ ਚੋਂ ਸਿੱਧ ਸੱਜੁਗ ਚੋਂ ਸਿੱਧਾ ਕਾਲਯੁਗ 14 ਕਾਲਯੁਗ ਤੋਂ ਯਕ ਬਿਲੇ ਆਇਆ ਹੈ ਇੱਕ ਘੜੀ ਦੇ ਮਿਲ ਤੇ ਤੇ ਬਿਲੇ ਆਇਆ ਸੱਜੋਗ ਸੱਚ ਨਾ ਮਿਲਿਆ ਬਿਲੇ ਬਿਲੇ ਆਕੀਦ ਰਹਾ ਸੱਚ ਨਾ ਉਹ ਸੱਚ ਨਾ ਕਲਪਨਾ ਕਰਨਾ ਗਿਆ ਬਾਹਰ ਨਾਲ ਜੁੜ ਗਿਆ ਕਲਜੋਗ ਹੋ ਗਿਆ ਕਲਪਨਾ ਦੇ ਯੁਗ ਰੂਪ ਕਲਪਨਾ ਦਾ ਜੋਕੀਦ ਹੈ ਕਲਪਨਾ ਹੁਕਮ ਦਾ ਵਿਰੋਧ ਕਰਨ ਵਾਲੀ ਚੀਜ਼ ਨੂੰ ਕਲਪਨਾ ਕਰਦੇ ਹਾਂ ਹਕੂਮਤ ਦਾ ਬਰੋਦ ਹਵੇ ਨੂੰ ਕੀ ਕਰਨਾ ਚਾਹੀਦਾ ਇਹਦਾ ਮਤਲਬ ਹੈ ਮੈਂ ਹਕੂਮਤ ਚੱਲੀ ਜਾਣ ਲੋ ਮੈਨੂੰ ਆਪਣੀ ਮਰਜ਼ੀ ਨਾਲ ਕੀ ਕਰਨਾ ਚਾਹੀਦਾ ਜੇ ਮੈਨੂੰ ਹਕੂਮਤ ਚੱਲਣਾ ਚਾਹੀਦਾ ਹਕੂਮਤ ਨੂੰ ਪਛਾਣਨਾ ਚਾਹੀਦਾ ਫਿਰ ਤਾਂ ਕਲਪਨਾ ਦੀ ਲੋੜ ਹੈਗੀ ਕਲਪਨਾ ਕਿ ਆਪਣਾ ਰਾਹ ਬਣਾਉਂਦਾ ਆਪਣੀ ਪਲਾਨ ਕੋਲ ਉਹਦੇ ਅਨੁਸਾਰ ਚੱਲਦਾ ਕੋਕੋਂ ਦੇ ਮਿੱਤਰ ਬੜੀ ਬੜਾਈ ਪਲਾਨ ਤੇ ਬੜੀ ਬੜਾਈ ਲੈਂਦੇ ਜਾਂਦਾ ਉੱਥੇ ਰੋਮੀ ਲਾਈਨ ਪਿਛਾਉਂਦਾ ਆਪਣੀ ਲੈਂਡ ਰੋਮੀ ਸਭ ਕੁਝ ਰੋਮੀ ਪੋੜ ਲਵੇ ਲੋੜੇ ਸਭ ਕੁਝ ਰੋਮੀ ਕਰਦਾ ਬਣੇ ਸਰਾਇ ਇਹਨਾਂ ਨੂੰ ਕਰਨਾ ਸਬਰਤ ਹੈ ਸੜਕਾਂ ਤੇ ਲੋਕ ਸਫਰ ਕਰਦੇ ਨੇ ਜਿਹੜੀ ਬੜੀ ਖੌਫ ਵਾਲੀ ਬਣੀ ਹੋਈ ਹੈ। ਦੂਰ ਪਾਸੇ ਨੂੰ ਕਰੀ ਜਾਂਦੇ ਪਹਾੜਾਂ 'ਚ ਜਾਣਗੇ ਕਿਵੇਂ? ਰਾਹ ਬੜੇ ਬਣਾਏ ਤੇ ਜਾਂ ਹੁੰਦੇ ਆਹ ਘਟਗਾਟੀ ਦੇ ਵਿੱਚ ਬੜੇ ਬਣਾਏ ਰਾਹ ਤੇ ਤੁਰੋ ਤੁਰੋ। ਉੱਥੇ ਜਿੱਥੇ ਰੋਡ ਹੈ ਪੁਲ ਵੀ ਲੱਗਿਆ ਹੋਇਆ। ਜਿੱਥੇ ਲੋੜਾ ਗੱਡੀ ਪਾਸ ਕਰਨਾ ਥੋ ਵੀ ਰੱਖਿਆ ਹੋਇਆ ਪਹਿਲਾਂ ਉਹਨਾਂ ਨੇ ਬਣਾਏ ਹੋਏ ਨੇ। ਕੀ ਅਲ ਦੇ ਰਾਹ ਚੱਲੀਦਾ ਹੁੰਦਾ ਰਾਹ ਚੱਲਦਾ ਹੋਵੇ ਜੀ ਇਹ ਜਾਂ ਜਾਨਵਰ ਉਹ ਵੀ ਕਦੇ ਹੀ ਉਹ ਕਦੇ ਸੱਚ ਪਛਾਣੇ ਜੇ ਸੱਚ ਨੂੰ ਪਛਾਣ ਲਵੇ ਸੱਚਾ ਵਾਲੇ ਕੋਈ ਗੱਲ ਨਹੀਂ ਸੱਚਾ ਦਾ ਸੱਚ ਕੀ ਹੈ ਕੀ ਆਦਮੀ ਕੁਝ ਕਰ ਸਕਦਾ ਇਤ੍ਰੂ ਭਗਤ ਨੇ ਸਾਰਾ ਢਲਾਤਾ ਸੀ ਕਿ ਇਹਦਾ ਢਲਾਇਆ ਜਾ ਸਕਦਾ ਜੇ ਢਲਾਇਆ ਜਾ ਸਕਦਾ ਜਾਤੇ ਬਾਅਦ ਹੋਰ ਕਿਸੇ ਨੇ ਚੋਰੀ ਇਹ ਨਹੀਂ ਨਾ ਕੰਮ ਕੀਤਾ ਉਹ ਹੀ ਸੀ ਪਰ ਸਾਰ ਕੱਢਿਆ ਗਿਆ ਸੀ ਉਸੇ ਦਾ ਬਹੁਤ ਸਾਰਾ ਨਿਕਲ ਗਿਆ ਤੇ ਇੱਕ ਕਹਾਣੀ ਦੇ ਬਾਅਦ ਦੂਈ ਕਿਉਂ ਨਹੀਂ ਹੋਦੀ ਜੋ ਤਰੂ ਨੂੰ ਹੋਇਆ ਪ੍ਰਲਾਦ ਨਾ ਹੋਇਆ ਜੋ ਪ੍ਰਲਾਦ ਨਾ ਹੋਇਆ ਤਰੂ ਲੜੀ ਹੋਇਆ ਅਜਿਹਾ ਦੁਆਰਾ ਨਾ ਆਇਆ ਦੁਬਾਰਾ ਹੋਰ ਕਿਸੇ ਨਾਲ ਨਹੀਂ ਹੋਇਆ ਜੇ ਬਾਬਾ ਦੀਪ ਸਿੰਘ ਜੀ ਚੱਕੇ ਲੜ ਸਕਦਾ ਸੀ ਤਾਂ ਹੁਣ ਆ ਆਦਮੀਆਂ ਤੋਂ ਪਹਿਲਾਂ ਵੀ ਲੜ ਸਕਦੇ ਸੀ ਦਸ ਬਾਸ਼ਾ ਬੇ ਉਹਦਾ ਤਾਂ ਕੋਈ ਲੜ ਨਹੀਂ ਸਕਿਆ ਉਹ ਜਦ ਉਹ ਆਪ ਨਹੀਂ ਰਹਾ ਤਾਂ ਫਿਰ ਸੀਸ ਚੱਕ ਕੇ ਲੜਨ ਲੱਗੇ ਤੇ ਆ ਉਹਦਾ ਸਰਸਾ ਨਹੀਂ ੜਕਾ ਸਕਿਆ ਜਦ ਉਹ ਨਹੀਂ ਰਹਾ ਫਿਰ ਅੜਕਦੇ ਰਹਾ ਅੜਕਣ ਲੱਗੇ ਝੂੜਨੀ ਤਾਂ ਹੋਰ ਕੀ ਹੈ ਚੂੜ ਤੇ علاوہ ਗੁਰੂਆਂ ਦੀ ਤੋਹੀਦ ਵੀ ਹੈ ਅਸਲ ਦੇ ਵਿੱਚ ਵੇਰੀ ਇਸ ਧਿਸਾ ਦੇ ਵਿੱਚ ਗੁਰੂਆਂ ਦੀ ਜਾਣਵੁੱਝ ਕੇ ਤੋਹੀਦ ਕਰਨ ਖਾਤਰ ਸਾਖੀ ਹੋਣਾ ਗੁਰੂ ਤਾਂ ਟਿਕਾ ਨਹੀਂ ਸਕਿਆ ਗੁਰੂ ਦਾ ਸਰਸਾ ਜੜਦੇ ਸਿੱਖ ਰਜੀਸਰ ਹੱਦ ਤੇ ਆ ਹਟਾਤਾ ਕਿ ਉਹ ਰਾਜਾ ਸੀ ਉਹ ਰਾਜਾ ਹੈ ਨਹੀਂ ਸੀ ਰਾਏ ਨੂੰ ਵੱਡਾ ਬਣਾਤਾ भक्त नु छोटा बनाता फातिना बनाता छोटा राजा बनाता शक्तिशाली बड्डा गुरबानी की कहदी है पंडित सूर छत्रपति राजा भक्त बराबर होर लखोए और लखोए गुरबानी पलटती गुरबानी तो ऑल्ट करती है सारी ਸਾਰਾ ਅਦਾਜ਼ ਗੁਰਬਾਣੀ ਨੂੰ ਪਲਟ ਰਿਹਾ ਹੈ ਤੁਹਾਡਾ ਮੈਂ ਦੱਸੇ ਕੌਣ ਨੇ ਮੂਰਖ ਹਨ ਇਹ ਤਾਂ ਬਾਹਾਂ ਖੜੀਆਂ ਗੱਲ ਪਾਗਲ ਇਹ ਨਹੀਂ ਪਤਾ ਵੀ ਗੁਰੂ ਦੀ ਤੋਹੀਰ ਇਹ ਲੋਕ ਸਿੱਖੀ ਨੂੰ ਤੇ ਛੱਡੇ ਉੱਚੇ ਚੱਕ ਦੇਣਗੇ ਇਹਨਾਂ ਗੱਲਾਂ ਨੇ ਸਿੱਖੀ ਡਾਊਨ ਕੀਤੀ ਹੈ ਲੋਕ ਤੁਹਾਨੂੰ ਪਾਗਲ ਸਮਝਦੇ ਨੇ ਬੇਵਕੂਫਰੇ ਆਪਣੇ ਗੁਰੂ ਅੱਗੇ ਤੁਸੀਂ ਕਰੀ ਜਾਂਦੇ ਕਦੇ ਵਿਚਾਰਿਆ ਹੀ ਨਹੀਂ ਅਸੀਂ ਕੀ ਕਹਦੇ ਜੋ ਕਹਿ ਰਹੇ ਹੋ ਵਿਚਾਰਿਆ ਹੀ ਨਹੀਂ ਕਦੇ ਜਨਮ ਦੂਆ ਨਹੀਂ ਹੁੰਦਾ ਜਨਮ ਵਾਲੀ ਦੀ ਗੱਲ ਛੱਡੇ ਦਿੱਤੀ ਰੋ ਗੁਰਬਾਣੀ ਵਾਲੀ ਗੱਲ ਦੇ ਛੱਡਤੀ ਵਿਸਾਰਤੀ ਕਿਸੇ ਨੂੰ ਚਿੰਤਾ ਇਸ ਗੱਲ ਦੀ ਹੈ ਈ ਨਹੀਂ ਕਹਾਂ ਜਨਮ ਹੋਊਗਾ ਰਹੀਓ ਇਹ ਗਲਤ ਗੁਰਬਾਣੀ ਦਾ ਤਾਂ ਜੋ ਵਿਸ਼ਾ ਤਿਆਗੇ ਦਿੱਤਾ ਬਿਲਕੁਲ ਸਹੀ ਵਿਸ਼ਾ ਹੀ ਰੱਖ ਲਿਆ ਵੀ ਅਸੀਂ ਤਾਂ ਦੁਨੀਆ ਤੇ ਰਾਜ ਕਰ ਲਿਆ ਬਸ ਗੁਰਬਾਣੀ ਨੂੰ ਤਿਆਗ ਕੇ ਦੁਨੀਆ ਤੇ ਰਾਜ ਕਰ ਲੈ ਗੁਰਬਾਣੀ ਦੇ ਕਾਹਦੇ ਰਾਜ ਵਾਲੇ ਪਾਸੇ ਨਾ ਜਾਇਓ ਦੁਨੀਆ ਦੇ ਕੋਈ ਉਪਲਬਧੀ ਹੈ ਜਸ ਰਾਜ ਵੀ ਜਸ ਵਾਸਤੇ ਹੀ ਹੁੰਦਾ ਜਸ ਹੋਵੇ ਸੰਪਤੀ ਵੀ ਜਸ ਵਾਸਤੇ ਹੀ ਕਰਦੇ ਹਾਂ ਅਸੀਂ ਚੱਗੇ ਕੰਮ ਵੀ ਜਸ ਵਾਸਤੇ ਹੀ ਕਰਦੇ ਹਾਂ ਅਸੀਂ ਦਾਨ ਪੁੰਨ ਵੀ ਜਸ ਵਾਸਤੇ ਕਰਦੇ ਹਾਂ ਅਸੀਂ ਜੇ ਸਭ ਤੇ ਬਿਰਲ ਜਸ ਜਾਵੇ ਟਿਕਾਉ ਜਸ ਹੋ ਜਾਵੇ ਇਹਨਾਂ ਯਤਨਾਂ ਨਾਲ ਜਿਹੜੇ ਪਹਿਲਾਂ ਦੱਸੇ ਨੇ ਜਸ ਟੈਂਪੋਰਰੀ ਜਸ ਉਦੋਂ ਸੰਸਾਰੀ ਜਸ ਸਾਰੀ ਜਸ ਹੈ ਜਿਹੜੀ ਦੁਨੀਆਂ ਕੀ ਬੜਾਈ ਜਿਹਨੂੰ ਕਹਿੰਦੇ ਨੇ ਸੰਸਾਰੀ ਜਸ ਹੈ ਉਹਦੀ ਉਮਰ ਬਹੁਤ ਥੋੜੀ ਹੁੰਦੀ ਹੈ ਸੰਸਾਰੀ ਜਸ ਦੀ ਉਮਰ ਨਹੀਂ ਜ਼ਿਆਦਾ ਹੁੰਦੀ ਸੰਸਾਰ ਦੀ ਉਮਰ ਥੋੜੀ ਹੈ ਪਰ ਜਿਹੜਾ ਇਹ ਝੂਠਾ ਜਸ ਹੈ ਮਾਇਆ ਝੂਠੀ ਹੈ ਇਹਦੇ ਜੋਰ ਨਾਲ ਜਸ ਉਹ ਵੀ ਝੂਠਾ ਹੋਊਗਾ। ਦਾਨ ਕਰੋਗੇ, ਪੁੱਤ ਕਰੋਗੇ ਭਾਇਆ ਕਿਹਨਾਂ। ਰਾਜ ਵੀ ਝੂਠਾ ਹੈ, ਇਹਦਾ ਜਸ ਵੀ ਝੂਠਾ ਚੰਗੇ ਕੰਮ ਕਰ ਲੋ, ਜਨ ਜਰ ਕਰਦੇ ਉਹ ਜਸਾ। ਉਹਦੇ ਨਾਲ ਵੀ ਜਸ ਝੂਠਾ ਹੀ ਹੋਊਗਾ। ਜੇ ਜਸ ਚਾਹੀਦਾ ਸੱਚਾ ਕਰੋ, ਸੱਚਾ ਪਰਮਾਨੰਡ ਜਾਸ ਰਹੇ ਇਹ ਜਿਆਦਾ ਚਾਹੀਦਾ ਪਰਮਾਨੰਡ ਜਾਸ ਹੋਊਗਾ ਸੱਚਾ ਜਾਸ ਸਤਿ ਨੂੰ ਪਛਾਣੇ ਤੇ ਜਿਹੜਾ ਜਿਆਦਾ ਸੱਚਾ ਜਾਸ ਹੋ ਗੁਰਮੁਖੀ ਆਖ ਹੈ ਗੁਰਮੁਖੀ ਬੂਝ ਗੁਰਮੁਖੀ ਏਕੋ ਜਾਣੇ ਐਸੇ ਕਲਾਈਨ ਖਿਚੋ ਜਿਹੜੀ ਕਿਸੇ ਨੇ ਖਿੱਚੀ ਹੋ ਦੂਰੀ ਚ ਕੋਪਰ ਲੈਵਲ ਲਿਖ ਉਹ ਲੈਣਾ ਦੁਨਿਆ ਦਾ ਬੈਰ ਵਿਰੋਧ ਦੁਨਿਆ ਦੀ ਉੱਚੀ ਏ ਚ ਇਹੋ ਬਿਟਾ ਦਿਓ ਚਾਹੇ ਉਪਦੇਸ਼ ਕਰਕੇ बिटा ਬਿਟਾ ਦਿਓ ਬਟੋਲ ਵਾਸਤੇ ਉਪਰਾਲੇ ਲੇਦੋ ਜਿਦੇ ਹੋ ਸਕਦੇ ਨੇ ਉਹਦਾ ਚਾਹੇ ਤੁਸੀਂ ਪੈਸਾ ਖਰਚ ਹੋ ਜਾਏ ਉਹਦੇ सारा जतन ਇਸ ਦੇ ਵਿੱਚ ਲਾਓ ਉੱਚੀ ਦੇ ਲੋਕਾਂ ਦੇ ਦਿਲਾਂ ਚੋਂ ਬਿਠੇ ਔਰ ਪ੍ਰੇਮ ਦੇ ਜ਼ਬਰਦਸਤੀ ਦੀ ਉੱਚੀ ਨਹੀਂ ਬਿਠੀ ਪ੍ਰੇਮ ਦੀ ਬਦਲੋ ਫਿਰ ਪ੍ਰੇਮਲੀ ਬਦਲ ਜਿਵੇਂ ਤਰਵਾ ਦੇ ਜੋੜਨਾ ਕਰਾਂਗੇ ਫਿਰ ਪ੍ਰਾਂ ਪ੍ਰੇਮ ਦੀ ਰਣ ਪ੍ਰੇਮ ਬਦੇ ਉੱਚੀ ਨੇ ਚ ਬਿਠੇ ਦੋ ਕਬ ਕਬ गुरु ਕਰ ਰਿਹਾ ਕੀਤਾ ਇਹ ਹੀ ਅਸੀਖਾ ਜੀ ਇਹਦੇ ਵਿੱਚੋਂ ਸੱਚਾ ਜਸ ਹੈ ਇਹਦੇ ਬਿਨੋਂ ਸੱਚਾ ਜਸ ਨਹੀਂ ਹੈ है, ਜਸ ਦੀ ਦਵਾ ਹੈ ਜਿਹੜੀ ਉਹ ਜਸ ਦੀ ਜਿਹੜੀ ਨੌ ਕਿਸ਼ਤੀ ਹੋ ਉਹ ਭਵ ਸਾਗਰ ਤਾਰਨ ਵਾਲੀ ਹੈ ਜਸ ਨਾ ਵਿੱਚ ਚੜਾ ਭਵ ਸਾਗਰ ਤਾਰੈ ਇਹ ਸੱਚੇ ਜਸ एवं सागर पार कर सकती है अगर अटे गुरु के बेटे कह के बिठा लिया ना इधर निरू हाथी री सील होले सोढिया दी बड़ी ऊंची कुल बली जाती थी कुल वाले ने बिठाया कोई कटिया कुल वाला होता शायद वो कह दे ना ये कुलदा की है पंडा ता ब्राह्मणों ने ऊंची कुल बोली जाती है सोढिया ਵੱਡੇ ਵੱਡੇ ਅਵਤਾਰ ਜਿਹੜੇ ਹੋਏ ਨੇ ਨਾ ਅਵਤਾਰ ਜਿਹੜੇ ਹੋਏ ਨੇ ਜੀਰਾਂ ਨੇ ਸੱਚ ਪ੍ਰਚਾਰਿਆ ਸੱਚ ਅਵਤਾਰ ਉਹਨਾਂ ਦੀ ਗੁਲ ਨੂੰ ਸੋਡੀਆਂ ਦੀ ਗੁਲ ਕਹਿੰਦੇ ਨੇ ਉਹ ਚਾਹੇ ਗੁਲ ਕੋਈ ਹੋਵੇ ਪਹਿਲਾਂ ਉਹਨਾਂ ਦੀ ਉਹ ਸੋਡੀਆਂ ਦੀ ਗੁਲ ਹੁੰਦੀ ਐ ਤਾਂ ਸੋਡਵਾਂਸ ਖਾਨ ਕਹਿੰਦਾ ਖਾਲਸਾ ਵੀ ਜ਼ੋਰ ਮਾਰਦਾ ਹੈ ਤਾਹੀ ਖਾਲਸਾ ਕਾਲਪੁਰ ਕੀ ਭੋਜ ਉਹ ਆਪ ਰਾਜ ਨਹੀਂ ਕਰਦੇ ਤੇ ਰਾਜ ਨਹੀਂ ਉਧਰ ਆਪ ਸੇਵਕ ਹੁੰਦੇ ਰਾਜ ਕਾ ਹੁੰਦਾ ਰਾਜ ਸੱਚ ਦਾ ਰਾਜਕੀ ਦਾ ਹੁੰਦਾ ਰਾਜ ਸੱਚ ਦਾ ਇਥੇ ਰਾਜਕੀ ਦਾ ਚਲਾ ਰਲਜੀ ਸੂ ਦਾ ਇਸੇ ਉਧਰ ਰਾਜ ਚਲਾਉਣਾ ਸੀ ਖਾਲਸਾ ਨੇ ਸੱਚ ਦਾ ਚਲਾਉਣਾ ਸੀ ਨਾਨਕ ਨੇ ਰਾਜ ਚਲਾਇਆ ਸੱਚ ਉਹ ਗਾਦੇ ਖੜਤਾ ਭੁੱਲ ਗਾ ਗਏ ਸੱਚ ਦਾ ਰਾਜ ਚਲਾਇਆ ਸੀਗਾ ਸੱਚ ਦਾ ਹੀ ਚਲਾਉਣਾ ਰਾਜ ਸੱਚ ਦਾ ਸੱਚ ਦਾ ਹੀ ਰਾਜ ਰਹੂਗਾ ਹੁੜ ਵੀ ਸੱਚ ਦਾ ਹੀ ਰਾਜ ਹੈ ਸੱਚ ਦੇ ਬਾਣੇ ਚ ਚਲਦੀ ਏ ਸ੍ਰਿਸ਼ਟੀ ਪਰ ਦਦਰੀ ਉਹਦੀ ਆ ਗੁਰਮੁਖਾਰੂ ਗੁਰਮੁਖੀ ਅੱਖਾਂ ਗੁਰਮੁਖੀ ਬੂਝਾ ਗੁਰਮੁਖੀ ਇੱਕੋ ਜਣਾ ਬੜਵੋ ਕਾਨੂੰਨੀ ਏ ਦੀਦੀ ਏ ਚਲਦੀ ਕਿਉਂ ਨਹੀਂ ਦੀਦੀ ਮੇਰਾ ਨਾਮ ਹੈ ਨਾਮ ਨਾਲ ਜੁੜੇ ਹੁਕਮ ਨਾਲ ਜੁੜੇ ਏ ਦੀਏ ਬਰੁਖਾ ਮੇਰਾ ਨਾਮ ਹੈ ਜਗ ਕਮੜਾ ਫਿਰੇ ਜੰਗਤਾ ਦੁਆਰਾ ਕਬੜਾ ਹੋਇਆ ਹੋਇਆ ਗੁਰਮਖ ਨਜ਼ਰੀ ਆਇਆ ਗੁਰੂ ਬਗਰਾ ਨਜ਼ਰੀ ਆਇਆ ਗੁਰੂ ਸੱਚ ਪਛਾਣ ਲਿਆ ਉਹ ਕੋ ਪਛਾਣ ਲਿਆ ਪਰ ਬੁਖਾਰ ਨੂੰ ਪਤਾ ਨਹੀਂ ਹੈ ਪਰ ਬੁਖਾਰ ਨੂੰ ਲੱਗਦਾ ਬਾਦਲਲਾ ਕੋ ਚੱਲਦਾ ਗੁਰਬਖ ਨੂੰ ਕਹਦਾ ਬਾਦਲ ਤਾਂ ਆਪ ਕਿਸੇ ਦੇ ਹੁਕਮ ਚ ਹੈ ਪਰ ਨੂੰ ਚੱਲਦਾ ਬਰਬੋਰ ਦਾ ਰਾਜ ਚੱਲਦਾ ਹੈ ਨੂੰ ਲੱਗਦਾ ਆਵਾਮਾ ਦਾ ਰਾਜ ਚੱਲਦਾ ਕੋ ਚੱਲਦਾ ਅਸਲ ਵਿੱਚ ਸਾਰਿਆਂ ਤੇ ਹਕੂਮ ਪਰਮੇਸ਼ਰ ਦਾ ਚੱਲਦਾ। ਬਾਕੀ ਸਭ ਭੁਲੇਖਾ। ਸੰਸਾਰ ਨੂੰ ਭੁਲੇਖਾ ਹੈ ਇਸ ਗੱਲ ਦਾ। ਬੇਨਾਮ ਹੈ ਜੱਗ ਕਮਲਾ ਫਿਰ। ਉਹ ਵੇਲੇ ਨਾਨਕ ਕਹਿੰਦਾ ਸਾਰਾ ਜੱਗ ਕਮਲ ਹੈ। ਉਹਦੇ ਵਿੱਚ ਤਾਂ ਸਾਰੇ ਨਾਮ ਜਪਣ ਵਾਲੇ ਵੀ ਸੀ, ਸੰਤ ਵੀ ਸੀ ਕਿਵੇਂ? ਜੱਗ ਜਦੋਂ ਜੱਗ ਨੇ ਵੀ ਸਾਰੇ ਸਾਰੇ ਧਰਮ ਜਿਹੜੇ ਅੱਜ ਪ੍ਰਚਾਰ ਰੋਦ ਨੇ ਸਾਰੇ ਉਦੋਂ ਸੀਗੇ ਉਹ ਜਿਹੜਾ ਬੂਟੀਆਂ ਵੀ ਜਿਹੜੇ ਫੇਰ ਦੁਬਾਰਾ ਸੁੱਕੇ ਬੂਟੇ ਹਰੇ ਹੋਏ ਹੋਏ ਤੇ ਆਜਿ ਪਾੜਾ ਮਾਰ ਜਾਂਦਾ ਹੁਣ ਫੁੱਟੇ ਆਉਣਗੇ ਪੱਤੇ ਜਾਂ ਸੱਚ ਦਾ ਪ੍ਰਚਾਰ ਘਟ ਜਾਂਦਾ ਫੇਰ ਬੂਟਿਆਂ ਉੱਤੇ ਨੇ ਪੱਤੇ ਉਹ ਕਹਿੰਦਾ ਕੁਰਬਾਨੀ ਦੱਸਦੀ ਹੈ ਗੁਰਮੁਖ ਨਦਰੀ ਆਇਆ ਗੁਰਮੁਖ ਆਪੇ ਆਨਾਰ ਨਾਨਕ ਗੁਰੂ ਨੇ ਕਹਿਆ ਆਪਣੇ ਆਪ ਨੂੰ ਗੁਰਮੁਖ ਕਹਿੰਦੇ ਜਿਹੜਾ ਵੀ ਗੁਰਮੁਖ ਕਿਤੇ ਹੁੰਦਾ ਪਹਿਲਾ ਭਗਤ ਗੁਰਮੁਖ ਸੇ ਉਹਨੂੰ ਨਦਰੀ ਆਇਆ ਜਿਹੜਾ ਹੋਰ ਗੁਰਮੁਖ ਹੋ ਉਹ ਗੁਰਮੁਖ ਕੇ ਸਟੈਂਡਰਡ ਦਾ ਲਾਭ ਗੁਰਮੁਖ ਨੂੰ ਦੱਸਿਆ ਹੈ ਬਾਕੀ ਕਿਸੇ ਨੂੰ ਦੱਸਿਆ ਹੀ ਨਹੀਂ ਸਾਰਿਆਂ ਮਤਾਂ ਸੱਚ ਨੂੰ ਪਛਾੜੂ ਸਰਦੀਆ ਸੱਚ ਨੂੰ ਪਛਾੜਣ ਵਾਲਾ ਗੁਰਬਖੋਦਾ ਸੱਚ ਨੂੰ ਪਛਾਣਨ ਵਾਲੇ ਦਾ ਲੋਗ ਗੁਰਬਖਾ ਵਿਦਵਾਨ ਦਾ ਤਾਂ ਜ਼ਿਕਰੇ ਨਹੀਂ ਹੈ ਬਾਣੀ ਚ ਕਿਤੇ ਵਿਦਵਾਨ ਨਾ ਪਛਾਣੇ ਨਾ ਪਛਾੜੂ ਦਵੇ ਵਿਦਵਾਨ ਤਾਂ ਆਪਣੇ ਗਰੂਰ ਕਢਾ ਕੇ ਆਪਣੇ ਗਰੂਰ ਚਲਾਉਦੇ ਹੁੰਦੇ ਨੇ ਆਪਣਾ ਹਕੂਮ ਚਲਵਾਉਂਦੇ ਹੁੰਦੇ ਨੇ ਸਾਰੇ ਵਿਦਵਾਨੇ ਜ਼ਰੂਰ ਬਣਾਵਣਾ ਕਹੋ ਬਣਾਪਣਾ ਕੇ ਚਾਲੂ ਕਰਦੇ ਨੇ ਸੰਸਾਰ ਚ ਇਹ ਸਾਰੇ ਵਿਦਵਾਨ ਕਬੜਿਆਂ ਦੀ ਸ਼੍ਰੇਣੀ ਚ ਨਹੀਂ ਆਉਦੇ ਇਹ ਕਬੜੇ ਨੇ ਸਾਰੇ ਹਾਕਮ ਵੀ ਕਬੜੇ ਵਿਦਵਾਨ ਵੀ ਕਬੜੇ ਜੱਗ ਸਾਰਾ ਕਬੜਾ ਰੋ ਬਾਕੀ ਵਿਚਾਰੇ ਲੋਕ ਤਾਂ ਕਬੜੇ ਹੋੜ ਜੇ ਪਾੜੀ ਕਬੜਾ ਹੈ ਤਪੂਪਰ ਕਮੜੇ ਕਿਉਂ ਰਹੀ ਹੋਣਗੇ ਜਿੱਧਰ ਉਹ ਲੈ ਜੂ ਡਾਂਗਣਾ ਉਧਰ ਹੀ ਚਲੇ ਜਾਣਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਜਾ ਦੀ ਸਕਦੇ ਜੋ ਕੋ ਜੋ ਜਿੱਦਲੇ ਏਰੀਏ 'ਚ ਲਿ ਜਾ ਕੇ ਉਹਨੂੰ ਚਰਾ ਰਿਹਾ ਉੱਥੇ ਚਰਦੇ ਪਾਲਲੇ ਪਾਸੇ ਨਹੀਂ ਜਾਣ ਦਿੰਦਾ ਜਮਨਾ ਤੇ ਉਹ ਕਬੂ ਨਾ ਪਾਰ ਹੁਤਾਰ ਚਰਾਵਤ ਕੈਸੇ ਖਸਮ ਹੋਵਾਰੇ ਉਹ ਤਾਂ ਉਹੀ ਆ ਪਾਲੀ ਜਦੋਂ ਉਹਨੂੰ ਮੰਨਦੜ ਉਦੇ ਪੜੇ ਤਾਂ ਪਾਰ ਦਾ ਨਾ ਪਾਰ ਹੈ ਉਹਨੇ ਪਾਸੇ ਤਾਂ ਸਭ ਮਾਇਆ ਦੇ ਰਸੋ ਮਾਇਆ ਦੇ ਰਸ ਚੁਗਦੇ ਨੇ ਉਹੀ ਵਿਦਵਾਨ ਚੁਗਦੇ ਨੇ ਉਹੀ ਰਾਜੇ ਚੁਗਦੇ ਨੇ ਉਹੀ ਸੀ ਮੁਕੱਦਮ ਕੁੱਤੇ ਚੁਗਦੇ ਨੇ ਉਹੀ ਸਰਦਾਰ ਚੁਗਦਾ ਤੇ ਗੁਰਮਖਾਇ ਬਾਗੀ ਕਰਦਾ ਜਿਹੜਾ ਕਿਸੇ ਰੂਹ ਵਾ ਤਾਹੀ ਦਾ ਬਗਾਵਤ ਕਹਿੰਦੇ ਨੇ ਕਰਦਾ ਸਾਡੇ ਖਿਲਾਫ ਬੋਲਦਾ ਇਹ ਪਾੜਾਲੇ ਰਸ ਦੀ ਗੱਲ ਕਰਦਾ ਇਹ ਕਮਲੇ ਦੇ ਸਾਰੇ ਹੁਣ ਨਾਨਕ ਦਾ ਕਹਿਆ ਬੇਰੋਵੇ ਜੱਗ ਕਮਲਾ ਫਿਰ ਨਾਨਕ ਦਾ ਵਿਦਵਾਨਾ ਨੂੰ ਕਿੱਥੇ ਅਜਵਾਉਂਗੇ ਗੱਲ ਰਾਜਾ ਨੂੰ ਕਿੱਥੇ ਆਉਗਾ ਕਦਮਾ ਨੂੰ ਕਿਥੋਂ ਅਜਵਾਉਗਾ ਯਾ ਤਾਂ ਨਾਨਕ ਕਮਲਾ ਆਇਆ ਫਿਰ ਉਹ ਕਮਲਾ ਕਿਹੜਾ ਬਖਦਿਆ ਨੂੰ ਗੁਰਬੰਡ ਜੋ ਕੱਢ ਦੋਗੇ ਤੁਸੀਂ ਜੇ ਬਾਣੀ ਸੱਚੀ ਹੈ ਤਾਂ ਅਸੀਂ ਸਾਰੇ ਕਮਲੇ ਹੀ ਹਾਂ ਕਾ ਸਾਰੇ ਸਿੱਖ ਐਸੋੜੇ ਕਮੜੇ ਹੀ ਨੇ ਯਾਵਰ ਬਾਣੀ ਝੂਠੀ ਮੰਨ ਲੋ ਜੇ ਤੁਸੀਂ ਕਮੜੇ ਨਹੀਂ ਤਾਂ ਬਾਣੀ ਝੂਠੀ ਹੈ ਜੇ ਗੁਰਬਾਣੀ ਸੱਚੀ ਹੈ ਅਸੀਂ ਕਮੜੇ ਆ ਜੇ ਅਸੀਂ ਸੱਚੇ ਆ ਤਾਂ ਗੁਰਬਾਣੀ ਝੂਠੀ ਹੈ ਐ ਤਾਂ ਤੋੜੋ ਪਿਛਾੜੀ ਕਿੱਧਰ ਨੂੰ ਤੋੜ ਲਈ ਇਹਦਾ ਸੰਸਾਰ ਨੂੰ ਕਹਿ ਦਿਓ ਗੁਰਬਾਣੀ ਝੂਠੀ ਹੈ ਭਾਈ ਅਸੀਂ ਨਹੀਂ ਮੰਨਦੇ ਸੱਚੀ ਜੇ ਗੁਰਬਾਣੀ ਸੱਚੀ ਹੈ ਮੰਨ ਲੋ ਵੀ ਅਸੀਂ ਕਬਲੇ ਆਂ ਸਿੱਖ ਸਾਰੇ ਵਿਦਵਾਨ ਮੰਨ ਲੈਣਾ ਅਸੀਂ ਕਬਲੇ ਆਂ ਇੱਥੇ ਬੋਰ ਆ ਗਿਆ ਹੁਣ ਕਾ ਇੱਧਰ ਹੋ ਜੋ ਤੇ ਇੱਧਰ ਹੋ ਜਾ ਜੇ ਗੁਰਬਾਣੀ ਸੱਚੀ ਹੈ ਤਾਂ ਜਿਹੜੇ ਸੱਚੀ ਮੰਨਦੇ ਨੇ ਉਹਨਾਂ ਨੂੰ ਗੁਰਬਾਣੀ ਦਾ ਲੜਫੜਾ ਲਾਊਗਾ ਜਿਹੜਾ ਨਹੀਂ ਪੜ੍ਹਣਾ ਉਹ ਸਿੱਖੀ ਤੋਂ ਖਾਰਜ ਹੋ ਉਹ ਵੀ ਲੜਾਈ ਸੀ ਰੰਤਬਰਸਾਹ ਬੇਲੇ ਸਿੱਖੀ ਛੱਡ ਗਏ ਸੀ ਉਹ ਵੀ ਗੁਰੂ ਦੇ ਨਾਲ ਨਹੀਂ ਸੀ ਖੜਦੇ ਮਰਜੀ ਗੁਰੂ ਨੇ ਕਰ ਦਿੱਤੀ ਗੁਰੂ ਨੇ ਵੀ ਛੱਡੇ ਦਿੱਤਾ ਬਾਅਦ ਦੇ ਵਿੱਚ ਰੰਤਬਰਸਾਹ ਪਰ ਉਹ ਆਪਣੀ ਮਰਜ਼ੀ ਨਾਲ ਛਡਾਉਂਦੇ ਸੀ ਸਿਰਫ ਮਰਜ਼ੀ ਦੀ ਗੱਲ ਸੀ ਕਹਿੰਦੇ ਐਲੀ ਹੋਤ ਸੇ ਕਦੇ ਮਰਜੀ ਗੁਰੂ ਬੋਲ ਲਵੇ ਗੁਰੂ ਰਹਿੰਦਾ ਨਹੀਂ ਉੱਥੇ ਸਿੱਖ ਨੇ ਇਹ ਮਾਰਕ ਕੋਲ ਕਹੋਗਾ ਲਾਈ ਮੈਂ ਆਪਣੀ ਮਰਜ਼ੀ ਨਾਲ ਗੁਰੂ ਚਲਾਵਾਂ ਅਸੀਂ ਮਰਜ਼ੀ ਨਾਲ ਗੁਰਦਾਰੇ ਚਲਾ ਰਹੇ ਹਾਂ ਗੁਰਦਾਰੇ ਗੁਰਬਾਣੀ ਅਨੁਸਾਰ ਚੱਲਣੇ ਚਾਹੀਦੇ ਗੁਰੂ ਦਾ ਘਰ ਗੁਰੂ ਦਾ ਘਰ ਗੁਰੂ ਦੀ ਮਰਜ਼ੀ ਨਾਲ ਚੱਲੂਗਾ ਆਪਣੇ ਘਰ ਅਸੀਂ ਆਪਣੇ ਮਰਜ਼ੀ ਨਾਲ ਚਲਾਉਂਦੇ ਅਸੀਂ ਗੁਰੂ ਦਾ ਘਰ ਵੀ ਆਪਣੀ ਮਰਜ਼ੀ ਨਾਲ ਚਲਾਉਂਦੇ ਕਿਹੜਾ ਇਹਦਾ ਸਾਨੂੰ ਸਿੱਖੀ ਦਾ ਕੀ ਅਸੀਂ ਸਿੱਖ ਕਿੱਥੋਂ ਦੇ ਰਹਿ ਗਏ ਕਿਹੜੇ ਪੱਖ ਤੋਂ ਅਸੀਂ ਸਿੱਖ ਰਹੇ ਹਾਂ ਕਭ ਦੁਨੀਆ ਜਾਣਦੀ ਐ ਬੋਲੇ ਕੌਣ ਦੂਜੇ ਤਾਂ ਤਾਂ ਨਹੀਂ ਕਹਿੰਦੇ ਇਹ ਅਗਲਾ ਸਾਡੇ ਤਾਂ ਗੁਰੂ ਆਏ ਕਹਿੰਦਾ ਇਹ ਕਹਿੰਦਾ ਰੋਲਾ ਪੈ ਜੂ ਤਾਂ ਘਰ ਦਾ ਹੀ ਕਹੂ ਕੋਈ ਘਰ ਦਾ ਹੀ ਕਹਿੰਦੇ ਹੁੰਦੇ ਨੇ ਨਾਨਕ ਘਰ ਦਾ ਹੀ ਸੀ ਜਿਹਨੇ ਉੱਠ ਕੇ ਕਿਹਾ ਭਗਤ ਘਰੇ ਪੈਦਾ ਹੋਇਆ ਦੂਜਾ ਵੇ ਬਗਾਵਤ ਕੀਤੀ ਸਮਾ ਬਗਾਵਤ ਦਾ चोड़ के खिलाफ बगावत करनी पड़ेगी बगावत है सिद्धी, क्या बैठ बैठ ल बैठ के टेलीविजन पे जथे मर्जी बैठ के विचार कर ले इस गल दा भी ये गल गलत है ठीक है ये होडी चलनी है कल जिनन नु पता लगो तोरियां नहीं पता पता लगो अगर पढ़ोगी ਪੈਟਰੋਲ ਬਹੁਤ ਤਿਆਰ ਹੈ ਤੋ ਤੋ ਪਏ ਪਰੇ ਪੁੜਾ ਅਗ ਪਾਉਗੀ ਸਭ ਨੂੰ ਆਗਨੀ ਸੀ ਵਿਰੋਧ ਬਧੇ ਰ ਬਰੂ ਤੋ ਤੋ ਪਏ ਹੈ ਦੀ ਸੀ ਜੇ ਗਾੜੀ ਇੱਕ ਜਗਾ ਲੱਗਦੀ ਹੁੰਦੀ ਆ ਬਾਕੀ ਸਾਰਾ ਹੀ ਆਪਰੇਸ਼ਨ ਸਾਰਾ ਆਪੇ ਵਿਸਪੋਰਟ ਹੋ ਜਾਂਦਾ ਹੁੰਦਾ ਆ ਡੀਪੂ ਚ ਇੱਕ ਚੀਜ਼ ਚੱਲ ਜੇ ਬਾਕੀ ਆਪੇ ਚੱਲ ਜਾਂਦੇ ਹੁੰਦੇ ਵਾ ਪਰਪਰ ਮਗਨ ਹੋਣੀ ਚਾਹੀਦੀ ਹੈ ਇੱਕ ਜਗ੍ਹਾ ਫਿਰ ਲੱਗੀ ਹੋਈ ਜਿੱਨਾ ਦਿਵਾਰੇ ਦਾ ਪਿਆਰ ਨਾ ਸਮਾਨ ਸਾਰਾ ਆਪੇ ਚੱਲ ਜਾਂਦਾ ਰੋਸ਼ਨੀ ਆਪੇ ਕਰ ਦਿੰਦਾ ਰਾਰਾ ਰਵ ਰਹਾ ਸਭ ਅੰਤਰ ਜੀਤੇ ਕੀਏ ਜਨਤਾ ਸਾਰਿਆਂ ਦੇ ਅੰਦਰ ਰਵ ਰਿਹਾ ਉਹ ਜਿਹਨੇ ਜਨਤ ਕੀਤੇ ਕੌਣ ਰਵ ਰਿਹਾ ਜੋਤ ਜਾ ਰਵ ਰਹੀ ਹੈ ਜੋਤ ਰਬ اور ਰਬ ਦੋ ਲਫ਼ਜ਼ ਅਡਾ ਅਡਾ ਰਬਣਾ ਹੁੰਦਾ ਚਿਬੜ ਲਾ ਕੇ ਚਿਬੜ ਜਾਣਾ ਜਦ ਛੱਡਦਾ ਤਾਂ ਝਟਕਾ ਪੈਂਦਾ ਐਸ ਤਰੀਕਾ ਨਾਲ ਜੁੜਨਾ ਉਹਦੇ ਨੂੰ ਟੁੱਟਣ ਵੇਲੇ ਝਟਕਾ ਪੈਣਾ ਉਹ ਨੂੰ ਕਹਿੰਦੇ ਹੈ ਵਨ ਮਾਇਆ ਤੇ ਰਮਿਆ ਹੋਇਆ ਵਨ ਮਾਇਆ 'ਚ ਫਸਿਆ ਹੋਇਆ ਫੜਿਆ ਹੋਇਆ ਜਦੋਂ ਨੂੰ ਬਾਹਰ ਕੱਢਾਂਗੇ ਝਟਕਾ ਪਊਗਾ ਬਾਹਰ ਤੋਂ ਲੰਘੋਤਾ ਬੰਦੂ ਝਟਕਾ ਪੈਂਦਾ ਓਹੀ ਜਮਕਾ ਡੰਡ ਬੂੜੂ 'ਤੇ ਲੱਗੇ ਝਟਕਾ ਪੈਂਦਾ ਰੂਜ ਜਾਂਦਾ ਆਪਣਾ ਜਿਹੜਾ ਬੰਦੇ ਆਇਆ ਸੀ ਮੇਰਾ ਮੇਰਾ ਬੰਦੇ ਆਇਆ ਸੀ ਜੋ ਜਦੋਂ ਛੱਟਣਾ ਪੈ ਗਿਆ ਮੇਰਾ ਨਹੀਂ ਸੀ ਸੋਬਣੀ ਵੀ ਆਗੀ 베ਰਾ ਨਹੀਂ ਹੈ ਝਟਕਾ ਤਾਂ ਪਿਆ ਉਹ ਬੰਦੇ ਹੋਇਆ ਹੈ ਜਿਹੜਾ ਹੁੰਦਾ ਨਾ ਪਰਮ ਨਾਲ ਉਹ ਰਵਿਆ ਨਹੀਂ ਹੋਇਆ ਹੁੰਦਾ ਰਵਿਆ ਹੋਇਆ ਹੁੰਦਾ ਜੇ ਜੇ ਰਵਿਆ ਹੋਇਆ ਹੋਵੇ ਫੇ ਝਟਕਾ ਨਹੀਂ ਪੈਂਦਾ ਸੋਚਾਲ ਚ ਹੁਕਮ ਰਵਿਆ ਹੋਇਆ ਰਵਿਆ ਨਹੀਂ ਸਪਰਸ਼ ਨਹੀਂ ਕਰਦਾ ਹੈ ਲੋਹ ਨੂੰ ਪ੍ਰਭਾਵਿਤ ਕਰਦਾ ਹੈ ਸੰਸਾਰ ਪ੍ਰਭਾਵਿਤ ਕਰਦਾ ਹੈ ਸਪਰਸ਼ ਨਹੀਂ दूरों ਮੈਗਨੇਟ ਦੂਰੋਂ ਹੀ ਪ੍ਰਭਾਵਿਤ ਕਰਦਾ ਲੋਹੇ ਨੂੰ ਕਰਦਾ ਨਾ ਕਰਦਾ ਇਹ ਕਰਦਾ ਦੂਰੋਂ ਪ੍ਰਭਾਵਿਤ ਕਰਕੇ ਨਾਲ ਲਾ ਕੇ ਆਪਣੇ ਖਿੱਚ ਕੇ ਆਪਣੇ ਜੁੜੇ ਤੇ ਪ੍ਰਭਾਵਿਤ ਕਰਨ ਹੋਰ ਗੱਲ ਜੁੜੇ ਤੇ ਪ੍ਰਭਾਵਿਤ ਆਇਆ ਜੁੜੇ ਤੇ ਪ੍ਰਭਾਵਿਤ ਕਰਦੀ ਆਗਿਆ ਜਦ ਜੁੜ ਜਾਂਦੀ ਹੈ ਕਿਸੇ ਰਤਾਉ ਘਰ ਬੁਲਦੀ ਲੋਹਾ ਪੱਟੀ ਚ ਪਾਉਂਦੇ ਗਰਮ ਕਰਦੇ ਆਗੋ ਤੇ ਸੁਭਾਜ ਆਦੀ ਗਿਰਦੇ ਨਿਕਲਦੀ ਹੌਲੀ ਹੌਲੀ ਆ ਪਾਣੀ ਚ ਇੱਕਦਮ ਪਾਉਂਦੇ ਆ ਬਾਲੀ ਘਰੋਂ ਜਾਂਦਾ ਤੇ ਨਿਕਲ ਜਾਂਦੀ ਹੈ ਅਗਵੀਪਾ ਉਹਦੇ ਚੋਂ ਬਾਹਰ ਪਰ ਜੋਤ ਸਰੀਰ ਤੇੋਂ ਨਿਕਲ ਜਾਂਦੀ ਹੈ ਪਰ ਕੁਝ ਟਾਈਮ ਲੱਗਦਾ ਤੇ ਕਹਤਾਂ ਹੁੰਦੇ ਦੇਖਣ ਬੰਦੇ ਕਿਉਂ ਤਰਸਦੇ ਨੇ ਹਮੇ ਨਮੀ ਹੋਈ ਪਰ ਐ ਨਿਕਲ ਜਿਵੇਂ ਚੱਲ ਨੇ ਲਾਈਟ ਆਫ ਹੁੰਦੀ ਸਾਹ ਆਕਾਸ਼ ਚ ਰਗੜ ਜਾਂਦਾ ਰਬਿਆ ਜਾਂਦਾ ਮਾਇਆ ਤੇ ਰਬਿਆ ਜਾਂਦਾ ਕੋਈ ਚ ਰਵੀ ਸੂਰਜ ਦਾ ਲੋ ਤਾਂ ਐ ਰੌਧਲਾ ਨਹੀਂ ਕਿਸੇ ਚ ਰਬਦਾ ਸੂਰਜ ਦਾ ਰਵੀ ਤਾਂ ਐ ਦੂਰੋਂ ਰਬਦਾ ਰੌਧਲਾ ਪਾਣੀ ਨੂੰ ਗਰਮ ਕਰ ਦਿੰਦਾ ਆਬ ਦੂਰ ਰਹਿ ਤਾ ਉਹਦੀ ਹੀਟ ਰਭਦੀ ਆ ਆਪਣੀ ਰੰਦਾ ਉਹਦੀ ਜੋਤ ਰਭਦੀ ਆ ਆਪਣੀ ਰੰਦਾ ਬਸ ਅੰਦਰਲੀ ਦੀ ਜੋਤ ਆ ਜਿਹੜਾ ਮਾਲ ਇਹ ਰਭਦਾ ਮਾਇਆ ਚ ਉਹ ਆਪਣੀ ਰੰਦਾ ਅਫਰ ਵੀ ਹੈ ਦੇਖੇ ਬੈਠਾ ਜੋਤ ਆ ਉਹਦੀ ਜਦ ਇਹਦੇ ਨਾਲ ਟੱਚ ਕਰਦੀ ਹੈ ਜਿਹੜੀ ਹੈ ਤੇ ਪ੍ਰਭਾਵ ਕਰਦੀ ਹੈ ਪਰਭਾਵ ਕਰਦਾ ਉਥੋਂ ਹੀ ਦੂਰ ਹੋਈ ਉਹ ਰਵ ਰਿਹਾ ਸਰਵਤਰਮਾ ਆ ਰਵ ਰਿਹਾ ਸਰਵਤਰਮਾ ਉਹ ਰਵ ਰਿਹਾ ਮਾਇਆ ਦੇ ਵਿੱਚ ਬਨ ਰਵ ਰਿਹਾ ਰਾਰੇ ਰਵ ਰਿਹਾ ਸਭ ਰਬ ਦੋ ਲਗ ਅਡੋੜੀ ਮੈਂ ਇਨਾ ਫਰਕ ਕਰਦਾ ਪਰਭਾਵ ਉਹ ਵੀ ਕਰੂਗਾ ਉਹ ਰਬੇ ਤੇ ਕਰੂਗਾ ਪ੍ਰਭਾਵ ਸਰੀਰ ਜੋਤ ਹੈ ਤੇ ਜਿਵੇਂ ਹੀ ਹੋਈ ਤਾ ਸਰੀਰ ਕੰਮ ਕਰਦਾ ਜੋਤ ਵਿੱਚ ਰਵਿਆ ਹੋਇਆ ਆਪ ਜੋਤ ਵਿੱਚ ਰਵਿਆ ਹੈ ਜੇਤੇ ਕੀ ਹੈ ਜਾਤਮਾ ਕੀ ਹੈ ਜਾਤਮਾ ਜੋਤ ਹੈ ਜੋਤ ਮੈਂ ਜਾਤਾ ਜੋਤ ਦੇ ਵਿੱਚ ਉਹ ਹੈ ਜਿਹਦੀ ਜੋਤ ਹੈ ਧੁੱਪ ਦੇ ਦਾਇਰੇ ਦੇ ਵਿੱਚ ਕੌਣ ਹੈ ਸੂਰਜ ਹੈ ਜਿੰਨਾ ਚਿਰ ਧੁੱਪੀ ਨਹੀਂ ਖੜੋਗੇ ਸੂਰਜ ਦਾ ਦਰਸ਼ਨ ਹੀ ਹੋ ਸਕਦਾ ਪੁੱਦੇ ਵਿੱਚ ਅੱਖ ਟੁੱਪੇ ਲੱਗੂਗੀ ਤਾਂ ਅੱਖ ਸੋਹਣੀ ਦਿਖੂਗਾ ਵਰਨਾ ਸੋਹਣੀ ਨਹੀਂ ਦਿਖੂਗਾ ਕਿਰਨ ਸਿੱਧੀ ਆਊਗੀ ਤਾਂ ਅੱਖ ਸੋਹਣੀ ਦਿਖੂਗਾ ਆਉਂ ਸ਼ੀਸ਼ੇ 'ਚ ਦੇਖ ਲੋ ਫਿਰ ਉਹ ਗੱਲ ਅਲੰਗ ਆ ਵੀ ਜ਼ੋਰ ਸ਼ੀਸ਼ੇ ਦੀ ਅਸੀਂ ਇੱਥੇ ਬੈਠੇ ਹਾਂ ਬਾਹਰੋਂ ਸੋਹਣੀ ਉਹ ਗੱਲ ਹੋਰ ਹੋਈ ਰਾਰੇ ਰਵ ਰਹਿਆ ਸਭ ਅੰਤਰ ਜਿੱਤੇ ਕੀਏ ਜਨਤਾ ਜਿੱਤੇ ਕੀਏ ਜਨਤਾ ਜਿਹਨੇ ਜਨਤਾ ਨੇ ਸਾਰਾ ਜਰਾ ਰਵ ਰਹੇ ਰਾਮ ਨਹੀਂ ਰਿਹਾ ਜਨਤਾ ਰਵ ਰਹੇ ਜਨਤਾ ਉਪਾਇ ਧੰਦੇ ਜੇ ਰਵ ਰਿਹਾ ਜਨਤਾ ਵਿੱਚ ਇੱਕ ਹੀ ਰਹੇਗਾ ਲੋਰੀ ਰਹੇ ਉਹਦੀ ਜੋਤ ਉਹਦੀ ਸ਼ਕਤੀ ਰਵ ਰਹੀ ਆ ਤੇ ਆਪ ਰਵਰੇ ਜਾਦਾ ਜਾਂਦਾ ਹੋਰ ਉਹ ਲੈ ਕੇ ਜਿਹਦੀ ਜੋਤ ਹੈ ਜੋਤ ਨਾਲ ਚਲੀ ਜਾਂਦੀ ਉਹ ਹੰਸਾ ਨਾ ਅਕੇ ਹੰਸਾ ਕੱਲਾ ਕੱਲਾ ਹੀ ਹੈ ਇੱਥੇ ਰਾਵ ਰਿਹਾ ਤਾਲਕੇ ਆਇਆ ਹੈ ਇਹਦੀ ਕਾਬਿਸ ਜੱਟ ਕਰਕੇ ਰਾਵ ਰਿਹਾ ਬਰ ਕਰਕੇ ਰਾਵ ਰਿਹਾ ਇਹਦੀ ਬਜਾਏ ਰਾਵ ਰਿਹਾ ਲਫ਼ਜ਼ ਵਰਤਦਾ ਜਿਵੇਂ ম্যাগਨੇਟ ਇੱਥੇ ਪਿਆ ਹੈ ਉਹਦੀ है ਜਿਹੜੀ ਹੈ ਉਹਦਾ ਹੋਰ ਇੱਥੇ ਪੈ ਲੋ ਹੇ ਪ੍ਰਭਾਵ ਕਰਦਾ ਬਿਨ ਰ ਟੱਚ ਕਰੇ ਕਰਦਾ ਨਾ ਪ੍ਰਭਾਵ ਇਹ ਮੈਂ ਬੈਠਾ ਬੱਖ ਹੀ ਸਰੀਰ ਤੇ ਪ੍ਰਭਾਵ ਕਰ ਰਿਹਾ ਮਨੋਲੋਜੀ ਬਨੋ ਦੀ है, ਉਹਦੀ ਇੱਛਾ ਨਾਲ ਸਰੀਰ ਦੇ ਵਿੱਚ ਜੰਤ ਉਪਾਏ ਧੰਦੇ ਸਭ ਲਾਏ ਕਰਮੋ ਹਵਾ ਤੈਨ ਨਾਮ ਲਿਆ ਜੰਤ ਉਪਾਏ ਧੰਦੇ ਸਭ ਲਾਏ ਧੰਦੇ ਸਭ ਲਾਏ ਇਤੇ ਉਪਾਏ ਸਭ ਦਾ ਕਿਤੇ ਕੀਏ ਵੀ ਲੋ ਸਭ ਤੇਰੇ ਕੀਏ ਜੰਤਾ ਜੰਤਾ ਉਪਾਏ ਪਰ ਕੀਏ ਚ ਹੈ ਫਰਕ ਜ਼ਰੂਰ ਉਪਾਏ ਜੋ ਤੇ ਲੈਵਲ ਤੇ ਹੁੰਦੇ ਨੇ ਇਸ ਵਜਲ ਦੇ ਸਤਿ ਸਰੀਰ ਕੀਤੀ ਹੋਈ ਚੀਜ਼ ਹੈ ਕਿਰਤ ਹੈ। ਬਾਹਰ ਕੀਤੀ ਹੋਈ ਚੀਜ਼ ਨਹੀਂ। ਉਹ ਤਾਂ ਆਲਰੇਡੀ ਹੈ। ਗੁਪਤ ਪ੍ਰਗਟ ਹੈ ਹੁੰਦਾ ਗੁਰ। ਇਹ। ਇਹ ਉਪਾਇ ਹੈ ਉੱਪਰ ਆ ਗਿਆ। ਉਪਾਇ ਉਹ ਮੱਖਣ ਉੱਪਰ ਆ ਗਿਆ ਨਾ। ਸੀ ਦੁੱਧ ਵਿੱਚੇ ਮਨ ਉੱਪਰ ਆ ਗਿਆ ਬਾਹਰ ਆ ਗਿਆ ਜੋ ਮਨ ਗੁਪਤ ਤੋਂ ਪ੍ਰਗਟ ਹੋ ਗਿਆ ਉਹ ਇਹ ਕਹੇ ਗੁਪਤ ਪ੍ਰਗਟ ਹੋਏ ਬੈਸਾ ਲੋਕ ਆਖੇ ਇਹ ਛਾਵਾ ਅੰਦਰ ਬਾਹਰ ਪ੍ਰਗਟ ਕਰ ਲਿਆ ਬਾਹਰ ਪ੍ਰਗਟ ਹੋਇਆ ਮਨ ਬਾਹਰ ਪ੍ਰਗਟ ਹੋ ਗਿਆ ਜਿੰਨਾ ਜਿਹੜੀ ਇੱਛਾ ਵਾ ਅੰਦਰ ਨਹੀਂ ਬਣੋ ਦਰ ਉਸ ਜੇ ਇੱਛਾ ਨਾ ਪ੍ਰਗਟ ਹੋਲ ਮਨ ਗੁਪਤ ਹੋ ਜਾਂਦਾ ਅੰਦਰ ਲੋਕ ਜਾਣਦੇ ਇਹ ਵਾਰ ਸੁਧਰਨਾ ਲੁੱਕਾ ਹੈ ਸੋਰ ਜਿਆਦਾ ਜਾਇ ਜੇ ਕੋਈ ਇੱਛਾ ਨਹੀਂ ਸੁਧਰ ਇਹਨੇ ਲੁਕਿਆ ਹੈ ਜਦ ਇਛਾ ਮੇ ਪਰਗਟ ਹੁੰਦੀ ਔਰ ਫਿਰ ਬਾਹਰ ਆ ਜਾਂਦਾ ਦੇ ਜੇ ਨਾਮ ਦੀ ਇਛਾ ਪਰਗਟ ਹੁੰਦੀ ਹੈ ਫਿਰ ਨਹੀਂ ਬਾਹਰ ਹੁੰਦਾ ਕੋਈ ਨਾ ਗੋਤ ਰੋਬਲ ਫਿਰ ਗੋਪਤਾ ਬਾਇਦੇ ਚਨਲ ਵਾਰ ਪਰਗਟ ਹੈ ਨਾ ਜੇ ਨਾਮ ਦੀ ਇੱਛਾ ਬਹਿ ਲੋ ਤੇ ਫਿਰ ਬੋਲ ਬਲਗੜੀ ਹੈ ਬਿਲਕੁਲ ਕੋਈ ਇਛਾ ਅਦਰੋਂ ਬਹਿ ਲੋ ਪੂਰੀ ਅਦਰੋਂ ਹੀ ਲੋ ਫਿਰ ਅੰਦਰੇ ਰਹਿਣਾ ਪੈਂਦਾ ਨੂੰ ਉਹ ਬੱਲੇ ਬਾਹਰ ਵਾਲੀਆ ਇਛਾ ਉਹਦੀ ਸੂਰਤੀ ਵਾਸਤੇ ਬਾਹਰ ਹੋ ਲੋ ਅੰਦਰ ਜੰਤੋਂ ਪਾਇਏ ਤੰਦੇ ਸਭ ਲਾਏ ਜੰਤੋਂ ਪਾਇਏ ਤਾਂ ਲਾ ਸਭ ਲਾਏ ਜਾਂ ਤੋ ਬਾਗ ਹੈ ਤੰਦੇ ਪੈਦਾ ਕੀਤੇ ਜਨ ਜਨਤਾ ਦਾ ਮਾਨ ਬਾਹਰ ਕਰਕੇ ਦੰਦੇ ਲਾਏ ਹੋਏ ਕਰਮ ਹੋਆ ਤਨ ਨਾਮ ਲਿਆ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਕਰਮ ਹੋਇਆ ਜਿਨ੍ਹਾਂ ਨੇ ਕਰਮ ਸੁਕਰਮ ਕੀਤੇ ਉਹਨਾਂ ਨੂੰ ਰੋਬ ਮਿਲ ਜਾਂਦਾ ਉਹਨਾਂ ਨੂੰ ਰੋਬ ਲਾਇਆ ਜਿਨ੍ਹਾਂ ਨੇ ਉਹ ਕੰਮ ਕੀਤਾ ਜਿਹੜਾ ਕਰਨ ਆਏ ਸੀ ਜਿਨ੍ਹਾਂ ਦਾ ਕਰਮ ਹੋ ਗਿਆ ਕੰਮ ਹੋ ਗਿਆ ਕਰਮ ਹੋਆ ਇਹਨਾਂ ਨੇ ਆਪਣਾ ਕੰਮ ਕਰ ਲਿਆ ਜਿਹੜੇ ਕੰਮ ਆਏ ਸੀ ਤੈਨੂੰ ਨਾਮ ਲਿਆ ਉਹਨਾਂ ਨੇ ਨਾਮ ਲੈ ਲਿਆ ਉਹ ਡੋਬ ਲ ਗਿਆ ਪੂਰਨ ਕਰਮ ਹੋਵੇ ਮੇਰਾ ਕਰਮ ਜੋ ਮੈਂ ਕਰਨਾ ਸੀ ਮੈਂ ਕਰ ਲਿਆ ਆਪਣੇ ਰੱਬੀ ਆਪਣਾ ਆਪੇ ਹੀ ਕਾਜ ਸਵਾਦਿਆ ਇਹ ਵਾਤੁਰਾ ਜੀ ਨੇ ਆਪਣਾ ਕਾਜ ਸਵਾਰ ਲਿਆ ਲੋ ਗੁਰੂ ਨਾਮ ਅਰਜ ਕਾਜ ਕੀ ਸਵਾਰਦਾ ਗੁਰੂ ਸਮਝਾਉਂਦਾ ਸੀਗਾ ਮਤਲਬ ਜਿਵੇਂ ਅਮੜ ਕਾੜ ਦੇ ਕਸ਼ੂਕ ਇਹ ਕਾਜ ਬਗੜਿਆ ਤਾਂ ਸਭ ਸਮਝਾ ਲਿਆ ਪਾਇਆ ਛੁਟ ਫਿਰ ਨਾਮ ਮਿਲਦਾ ਉਹ ਤੇ ਲੱਲੇ ਲਾਇ ਧੰਦੇ ਜਿਨ ਛੋਡੀ ਮਿੱਠਾ ਮਾਇਆ ਮੋਹ ਕੀਆ ਲੱਲੇ ਲਾਇ ਤਦੈ ਜਿਨ ਛੋਡੀ ਤਦੈ ਲਾ ਕੇ ਇੰਜ ਡੋਰ ਛੜਤੀ ਸੁੰਤ ਦੀ ਅਤਰੋ ਸਾਥ ਆਪ ਲੈ ਰਹੇ ਵਾਰ ਤਦੈ ਆਤਮੋ ਲੱਗੀ ਹੋਈ ਆ ਬਾਹਰ ਮਿੱਠਾ ਮਾਇਆ ਮੋਹ ਕੀਆ ਇੰਡੀਪੈਂਡੈਂਟ ਹੈ ਤੂੰ ਆਪਣਾ ਕਾਰ ਸਵਾਰ ਐਨਾ ਟਾਈਮ ਹੈ ਚਾਹੇ ਬਗਾੜ ਚਾਹੇ ਸਵਾਰ ਜੋ ਤੇਰੀ ਮਰਜ਼ੀ ਕਰ ਇੰਡੀਪੈਂਡੈਂਟ ਹੈ ਆਪਣੀ ਮਰਜ਼ੀ ਕਰ ਦੂ ਸਿਰਫ ਕਾਦੇ ਵਾਸਤੇ ਆਪਣਾ ਕੰਮ ਸਵਾਰਣ ਵਾਸਤੇ ਜਾਣਾ ਸਵਾਰਣ ਵਾਸਤੇ ਮਾਇਤਰੀ ਦੇ ਖਲਦਸ ਇੰਡੀਪੈਂਡੈਂਟ ਨਾ ਬਦਲ ਲਈਏ ਵੀ ਛੋਡੀ ਦਾ ਦੁਨੀਆਂ ਦਾ ਹਿੱਸਾ ਇਕੱਠਾ ਕਰਕੇ ਆਪ ਮੈਂ ਖਾ ਜਾ ਮੈਂ ਇਕੱਠਾ ਕਰ ਲਵਾਂ ਸਾਰਿਆਂ ਦਾ ਸਰੀਰ ਨੂੰ ਜਿਹੜੀ ਲੋੜਾਂ ਨੇ ਇਹਦੇ ਵਿੱਚ ਦਾ ਕੋਈ ਦਖਲ ਨਹੀਂ ਆਤਮਾ ਦੀ ਲੋੜ ਦਾ ਤੇ ਸਾਰਾ ਖਰਾਕ ਦਾ ਖਾਵੇ ਜੇਰ ਖਾਲਵੇ ਚਾਹੇ ਅਬਰਤ ਪੀ ਲਵੇ ਬੇਖਾਲਵੇ ਚਾਹੇ ਅਬਰਤ ਖਾ ਲਵੇ ਕਿਸ ਲੱਗੀ ਪਿਆਸ ਅਬਰਤ ਸਹੀ ਖਾਏ ਇੱਥੇ ਡਿਪੈਂਡੈਂਟ ਹੈ ਸਰੀਰ ਵਾਲੀ ਸਾਰੀ ਕੋਈ ਡਿਪੈਂਡੈਂਸੀ ਦਾ ਸਰੀਰ ਇਹਦਾ ਬੇ ਜੀਰੋਲੀ ਖਰਾਕੇ ਦੀ। ਨਾ ਪੈਰ ਕਰ ਕਰਦਾ। ਨਾ ਬਹੁਤ ਸਮਝ ਦੇ ਬਸ ਚ ਰਿਹਾ। ਇਹਦੇ ਬਸ ਚ ਕੁਛ ਨਹੀਂ। ਕੁਦਰਤ ਦੇ ਦੇ ਬਸ ਚ ਨਹੀਂ। ਕੁਦਰਤ ਕਦਰ ਦੀ ਹੈ। ਇਹਦੇ ਅੰਦਰ ਆਤਮਾ ਹੈ। ਉੱਤਰ ਇਹਦੇ ਸਤਗੁਰੂ ਭੇਜੇ ਬੈਠਾ ਉਹ ਇਹ ਤੋਂ ਚਾਹੁੰਦਾ ਇਹਨੂੰ ਗਿਆਨ ਦੇਣਾ। ਕੰਨਾ ਥਈ ਅੱਖਾਂ ਥਈ ਜੋ ਵੀ ਹੈ। ਸਮਝਾਉਣਾ ਕੁਝ। ਜਿਹਨੇ ਸਮਝਣਾ ਸਮਝ ਲਵੇ ਨਹੀਂ ਸਮਝਦਾ ਸਮਝ ਕੇ। ਐਨਾ ਹੀ ਕੰਮ ਹੈ। ਇਹ ਤੇ ਕੁਝ ਸਮਝਣ ਆਇਆ ਹੈ ਲਾਹ ਲੜ ਆਇਆ ਸਕੂਲ ਕਾਲ ਜਨ ਕੀ ਕਰਦੇ ਹੁੰਦੇ ਪੈਸੇ ਕਾਹੜਾ ਕਰਦੇ ਹੁੰਦੇ ਪੈਸੇ ਕਵਾਉੜੀ ਜਿਹੋਦੇ ਪੈਸੇ ਖਰਚ ਕਰਦੇ ਹੁੰਦੇ ਸਕੂਲ ਕਾਲ ਤੋਂ ਗਿਆਨ ਪ੍ਰਾਪਤ ਕਰ ਜਾਂਦੇ ਨੇ ਪੈਸੇ ਦੇ ਕੇ ਪੈਸੇ ਦੇ ਕੇ ਗਿਆਨ ਪ੍ਰਾਪਤ ਕਰਨ ਹੋਇਆ ਪੈਸੇ ਕਿਹੜੇ ਦਿੰਦਾ ਜਿਹਦੀ ਬਿੰਦ ਕਰਦਾ ਸੇਰ ਨੂੰ ਪੈਸੇ ਦੇ ਦਿੰਦਾ ਸਾਰਾ ਖਰਚੀ ਕਰਦਾ ਹੈ ਤੇ ਸਰੀਰ ਤੇ ਸਰੀਰ ਤੇ ਖਰਚ ਹੁੰਦਾ ਜੋ ਬੇਤ ਕਰਦਾ ਸਾਰਾ ਸਰੀਰ ਤੇ ਖਰਚ ਹੁੰਦਾ ਇਹਦੀ ਫੀਸ ਹੈ ਇਹ ਬਾਹਰ ਨੇ ਇਹ ਕਬੂਦਾਂ ਵੀ ਇਹ ਵੀ ਹੈ ਕਬਾਉਂਦਾ ਵੀ ਇਹ ਤੇ ਪੜਦਾ ਵੀ ਹੈ ਵਾਸਤੇ ਕਬਾਉਂਦਾ ਜਮਾ ਕਰਵਾ ਤਰੀਕਾ ਬੋਲਦਾ ਅਸੀਂ ਪੜ੍ਹਨ ਵਾਸਤੇ ਨਹੀਂ ਕਹਿੰਦੇ ਜਮਾ ਕਰਨ ਵਾਸਤੇ ਕਹਿੰਦੇ ਪੜ੍ਹਨ ਛੱਡਿਆ ਹੋਇਆ ਸਾਰੇ ਚੇਲੇ ਬਣਾਏ ਸੀ ਉਹਨਾਂ ਤਾਂ ਤੇਰੀ ਕੀਤੇ ਸੀ ਉਹਨਾਂ ਤਾਂ ਜਿੱਦੇ ਜੀ ਪੈਦਾ ਕੀਤੇ ਆਪਣੇ ਚੇਲੇ ਪ੍ਰਬੰਧ ਕਰਕੇ ਉਹਨਾਂ ਦੇ ਅੰਦਰ ਬੈਠਾ ਸੀ ਉਹਨੂੰ ਗਿਆਨ ਦੇਣ ਨੂੰ ਇੱਕ ਸੰਸਾਰੀ ਇੱਕ ਬਣਾਰੀ ਕਲਾਏ ਦੇ ਬਾਣ ਉਹ ਹੀ ਸੰਸਾਰੀ ਹੈ ਤੂੰ ਹੀ ਬਣਾਰੀ ਹੈ ਤੈਨੂੰ ਤੈਨੂੰ ਬਾਰਾਂ ਦੀ ਆਦਤ ਹੈ ਪਰ ਕਰੀਓ ਦੇ ਹੁਕਮ ਦੇ ਵਿੱਚ ਨਹੀਂ ਉਹਦੇ ਹੁਕਮ ਵਿੱਚ ਜਿਹੜਾ ਕੋ ਕਰਾਊਗਾ ਕਰੀ ਜਾਈ ਤੈਨੂੰ ਦੋਸਤ ਕੋਈ ਨਹੀਂ ਦਾ ਤੈਨੂੰ ਫੁਰਨਾ ਪਾੜੇ ਦਾ ਪੈਦਾ ਕਰੇ ਦਾ ਪੁੱਤ ਨਹੀਂ ਮਾਰੇ ਦਾ ਭਾਪ ਕੋਈ ਜੇ ਹੱਕਬੂ ਚੱਲਨੇ ਲੱਗਾ ਮੈਨਾ ਪੁੰਨਾ ਨਾ ਪਾਤਾ ਪਰ ਇਹ ਤਾਂ ਹੋਰ ਰਾਬਾ ਬਹਿ ਗਿਆ ਹੱਕਬੂ ਨੂੰ ਪਛਾਣਿਆ ਨਾਮ ਨਹੀਂ ਲਿਆ ਜਗ ਕਬੜਾ ਫਿਰਿਆ ਕਬੜਿਆਂ ਦੇ ਟੋਲੇ ਚ ਰਣ ਗਿਆ ਕਬੜੇ ਸਾਰੇ ਸੀ ਵੀ ਕਬੜਾ ਹੋ ਗਿਆ ਜਿਹੜਾ ਸੰਸਾਰ ਕਬੜਾ ਹੋਵੇ ਨਵਾ ਆਇਆ ਕਿਉਂ ਨਹੀਂ ਕਬੜਾ ਹੋ ਤਾ ਕੰਪਰੇ ਕਬੜਿਆਂ ਦੇ ਜਲੂ ਲੈ ਲਿਆ ਕੱਲਾ ਕੀ ਕਰਦਾ ਕਮੜਾ ਕਾਣਾ ਹੁੰਦਾ ਚਾਰ ਆਦਮੀ ਇੱਕ ਆਸੂ ਕਮੜਾ ਕਰ ਦਿੰਦੇ ਨੇ ਇੱਥੇ ਦਾ ਸਾਰਾ ਸੰਸਾਰ ਕਮੜਾ ਕਰਨਾ ਲੱਗ ਗਿਆ ਕਹਿੰਦਾ ਹਾਲ ਤੋ ਦਾ ਚਾਰਾ ਨੂੰ ਕਮੜਾ ਕਰ ਛੱਡਿਆ ਉਹ ਕੱਲਾ ਪੈ ਗਿਆ ਚਾਰ ਸੀ ਉਹ ਇੱਕ ਪਾਸੇ ਸਾਰਾ ਸੰਸਾਰ ਇੱਕ ਪਾਸੇ ਕੱਲਾ ਪੈਦਾ ਹੋਇਆ ਉਹ ਕਮੜਾ ਦਾ ਕਰੇ ਦੇਣਾ ਕਮੜਾ ਨੇ ਹੋਰ ਕੀ ਕਰਦੇ ਨੇ ਫਿਰ ਇਹਦੇ ਸੰਸਾਰ ਹੈ ਕਮੜੇ ਕਰਤੇ ਹੈ ਜਬ ਵੀ ਕਮੜੇ ਕਰੀ ਜਾਂਦੇ ਨੇ ਜੇ ਸਸਾਰ ਸਿਆਣਾ ਹੋ ਜਾਏ ਕਵਲੇ ਆਲੂ ਵੀ ਸਿਆਣੇ ਕਰ ਲੱਗ ਜੂਗਾ ਇਹ ਜਦੋਂ ਕਵਲੇ ਆਨੂੰ ਸਿਆਣੇ ਕਰ ਲੱਗ ਜੂਗਾ ਉਹ ਸਾਜੂਗ ਦੀ ਲੜੀ ਕਹਿ ਲੱਗੀ ਹੈ ਇੱਥੇ ਜੈਸਾ ਦੀ ਪੜਾਈ ਬਦਲ ਜਾਂਦੀ ਹੈ ਨਾ ਸੰਸਾਰ ਦੀ ਸੋਚ ਬਦਲ ਜਾਂਦੀ ਹੈ ਫਿਰ ਕਵਲੇ ਆਉਂਦੇ ਨੇ ਸਿਆਣੇ ਬੜੀ ਜਾਂਦੇ ਨੇ ਹੁਣ ਸਿਆਣੇ ਆਉਂਦੇ ਨੇ ਕਵਲੇ ਬੜੀ ਜਾਂਦੇ ਨੇ ਇਹੋ ਗੱਲ ਦਾ ਕਲਯੋਗ ਕਲਪਨਾ ਛੱਟ ਕੇ ਆਉਂਦਾ ਹੈ ਕਲਪਨਾ ਸ਼ੁਰੂ ਹੋ ਜਾਂਦੀ ਆ ਕੇ ਧਰਮੀ ਆਉਂਦਾ ਧਰਮੀ ਹੋ ਜਾਂਦਾ ਇੱਥੇ ਆ ਕੇ ਪੁੱਢੀ ਆਉਂਦਾ ਪਾਪੀ ਹੋ ਜਾਂਦਾ ਆ ਕੇ ਉਹਨੂੰ ਕੀਤੇ ਦਾ ਫਲ ਸਰੀਰ ਮਿਲਿਆ ਨਾ ਪਰ ਪਾਪੀਆਂ ਦੇ ਦੇਹ ਚ ਆ ਕੇ ਪਾਪੀ ਬਣ ਜਾਂਦੇ ਇਸ ਮਾਹੌਲ ਨੂੰ ਬਦਲ ਰਹੇ ਨੇ ਇਸ ਮਾਹੌਲ ਨੂੰ ਬਦਲ ਰਹੇ ਨੇ ਪਰ ਜਿਨ੍ਹਾਂ ਨੇ ਮਾਹੌਲ ਨਹੀਂ ਬਦਲ ਦੇਣਾ ਉਹ ਵਿਰੋਧ ਕਰ ਰਹੇ ਨੇ ਇੱਥੇ ਦੀ ਹਕੂਮਤ ਨੂੰ ਬਦਲ ਰਹੇ ਨੇ ਇੱਥੇ ਦਾ ਸਭ ਨੂੰ ਬਦਲ ਰਹੇ ਨੇ ਇੱਥੇ ਦੀ ਸਾਰੀ ਬਾਤਾਵਰਦ ਨੂੰ ਬਦਲ ਰਹੇ ਨੇ ਭਗਤ ਵੀ ਸਾਰੇ ਮਿਲ ਜੁਲ ਕੇ ਰਹਿਣ ਅਮਨ ਨਾਲ ਰਹਿਣ ਪ੍ਰੇਮ ਨਾਲ ਰਹਿਣ ਇੱਕ ਬਤਾਇਆ ਉਸਕੇ ਬਾਅਦ ਹੀ ਨੇ ਇਹ ਸੱਚ ਦੱਸਿਆ ਉਹਨੂੰ ਸਮਝਾਇਆ ਪਰ ਉਹ ਕਹਿੰਦੇ ਨਹੀਂ ਹਰਿਆਣੇ ਨੂੰ ਪਾਣੀ ਨਹੀਂ ਲੱਭ ਗਿਆ ਸੀ ਪੰਜਾਬੀ ਸਾਨੂੰ ਰਜਰ ਸੀਟਾਂ ਚਾਹੀਦੀਆਂ ਨੇ ਕੋਈ ਕਿਸੇ ਦੀ ਲਕੀਰ ਕੱਢ ਲੈਂਦਾ ਕੋਈ ਕਿਸੇ ਦੀ ਲਕੀਰ ਕੱਢ ਲੈਂਦਾ ਆਪਣੀ ਮੂਰਤੀ ਟੋੜੀ ਸਾਰੇ ਸ਼ਰਾਰਤੀ ਨੇ ਦੁਆਹੋਂ ਦਾ ਮੇ ਪਾਣੀ ਸਾਰੇ ਸ਼ਰਾਰਤੀ ਨੇ ਤੇਵਾ ਜਾਲਾਲੇ ਰੋਕ ਲੈਣ ਪਰੇ ਕਸ਼ਵੀਰ ਵਾਲੇ ਰੋਕ ਲੈਣਾ ਸੀ ਤੁਹਾਨੂੰ ਦੇਣਾ ਹੀ ਨਹੀਂ ਫਿਰ ਫਿਰ ਕਿਉਂ ਆ ਰੱਬ ਸਾਰਿਆਂ ਦੇ ਰੋਗ ਫਿਰ ਕਿਉਂ ਪਾਣੀ ਪਰਮੇਸ਼ਰ ਨੇ ਕਿਤਾਬ ਕਬਜਾ ਸਾਡੇ ਕਬਜਾ ਆਕਾਸ਼ ਤੇ ਕਬਜਾ ਵਾਰਡਰ ਬਣਾ ਲਏ ਅਸੀਂ ਰੇੜੇ ਰੇੜੇ ਕੀ ਕਰ ਰਹੇ ਆ ਜੀ ਆਪਣੇ ਪੈਰ ਕੋਹੜਾ ਆ ਤੇ ਵਾਰ ਰਿਹਾ ਜਿੰਨਾ ਸਿਆਣਾ ਹੁੰਦਾ ਜਾ ਰਿਹਾ ਜਿੰਨੀ ਪੜ੍ਹਾਈ ਹੈ ਨਾ ਅਸਰ ਸੰਸਾਰ ਦੀ ਜਦੋਂ ਆਦਮੀ ਅਨਪੜ੍ਹ ਸੀ ਇਹ ਤੋਂ ਸੀ ਜਿਹੜੀ ਆ ਹੈ ਸਾਰੀ ਦੁੱਖਾਂ ਦਾ ਸਾਰਾ ਆਪਣਾ ਦਰਦਾਂ ਕੀਤੇ ਨੇ ਦਰਦਾਂ ਸੁਖ ਪੈਦਾ ਕਰਦੇ ਕਰਦੇ ਨੇ ਦੁੱਖ ਇਹਨੇ ਪੈਦਾ ਕਰ ਲਿਆ ਕਿ ਡਿਪਰੈਸ਼ਨ ਹੋ ਗਿਆ ਉਹਨੇ ਨੂੰ ਇਹ ਪਤਾ ਨਹੀਂ ਕਰੀਏ ਸੀ ਸੁਖ ਤਾਹ ਉਦਾਸੀ ਜੇ ਸਾਰਿਆਂ ਨੂੰ ਆਪਣੇ ਬੀਤ ਬੜੋ ਪਰ ਇਹਨਾਂ ਦੁਸ਼ਮਣੇ ਪੈਣਾ ਕੀ ਤੇਰੇ ਆਪਣੇ ਤੋ ਛੁੜਾ ਤੇ ਛੁੜ ਪੈਣਾ ਜੇ ਸਵਾਰਥ ਹੈ ਸਵਾਰਥ ਰੂਹ ਤੇ ਦੁਸ਼ੂੜੀ ਰੋ ਪੈਦਾ ਹੋ ਗਤ ਪੈਦਾ ਹੋ ਬੇਰਾ ਬੇਰਾ ਬੇਰਾ ਬੇਰਾ ਬੱਟਾ ਪੈ ਗਿਆ ਜੇ ਤੀ ਬੱਟਾ ਪੈ ਗਿਆ ਜਾਊਗਾ ਲੱਲੇ ਲਾਇ ਧੰਦੇ ਜਿਨ ਛੋਡੀ ਮਿੱਠਾ ਮਾਇਆ ਮੋਹ ਕਿਆ ਉਹਨੇ ਧੰਦੇ ਲਾ ਕੇ ਸੇਤੀ ਸਾਰੀ ਛੜਤੀ ਆਪਣੀ ਮਰਜ਼ੀ ਕਰੋ ਕੰਮ ਬਗੜ ਲੋ ਚਾਹੇ ਸੰਭਾਲ ਲੋ ਜੋ ਪੜਨਾ ਆਇਆ ਹੈ ਆਇਆ ਤੇ ਛੱਡਿਆ ਕਰ ਦਾ ਕੁਝ ਨਹੀਂ ਉਧਾ ਭਾਈ ਪੜ ਸਕੂਲ ਵਾਲੇ ਵੀ ਕਹਿੰਦੇ ਨੇ ਪੜੋ ਉਪਦੇਸ਼ ਸਕੂਲ ਵਾਲਾ ਪੜਾਇਆ ਜਾਂਦਾ ਟੀਚਰ ਲੈਕਚਰ ਕਰਕੇ ਚਲਾ ਗਿਆ ਉਹ ਜ਼ਿੰਮੇਵਾਰੀ ਕਿਦੀ ਹੈ ਪੜ ਵਾਲੇ ਦੀ ਅਸੀਂ ਆਏ ਕੀ ਕਰਨ ਕਿਉਂ ਨਹੀਂ ਕਰ ਰਹੇ ਇਹ ਘਾਟੇ ਵੱਧਦੇ ਦੀ ਜੁਬਾਰੇ ਸਾਡੀ ਬਸ ਇਸ ਘਾਟੇ ਵੱਧਦੇ ਦੀ ਮਿੱਠਾ ਮਾਇਆ ਮੋਹ ਗਿਆ ਮਾਇਆ ਮੋਹ ਬਠਾਉਣਾ ਤੁਹਾਨੂੰ ਜਰੂਰ ਇਹਨਾਂ ਨੂੰ ਜਰੂਰ ਕੀਤਾ ਹੋਰ ਕੁਝ ਨਹੀਂ ਉਹਨੇ ਆਪਣੇ ਗੜਬੜ ਕੀਤੀ ਹੋਰ ਗੜਬੜ ਕੁਛ ਨਹੀਂ ਕੀਤੀ ਉਹਨੇ ਬਾਕੀ ਸਾਰੇ ਉਹਨੇ ਸ਼ਰਾਰਤ ਕੋਈ ਨਹੀਂ ਕੀਤੀ ਬਾਇਆ ਉਹ ਜ਼ਰੂਰ ਬਿਠਾ ਕੇ ਤੇ ਉਹ ਤਾਂ ਕੀਤਾ ਇਹਨਾਂ ਨੇ ਆ ਜਿਹੜੀ ਸ੍ਰਿਸ਼ਟੀ ਪੈਦਾ ਹੋਣ ਦੀ ਜ਼ਿੰਮੇਵਾਰੀ ਹੈ ਨਾ ਇਹ ਨਹੀਂ ਸੀ ਪੂਰੀ ਹੋਣੀ ਬਹੁਤ ਹੈ ਵੀ ਨਾ ਬੱਚੇ ਨਹੀਂ ਪੜਦੇ ਇਹ ਉਹਨੇ ਪੜਨੇ ਸੀ ਉਹਦੇ ਹੀ ਇਹਨਾਂ ਇਹ ਹੋਰ ਹੈ ਜ਼ਰੂਰ ਇਹ ਦੇਵਰਾ ਕਬੂਲੀ ਸੀ ਜੰਦਾ ਇਹ ਸੇ ठग ਤੇ ਉਹ ਥੱਕ ਕੇ ਬੋਠ ਠਗੌਰੀ ਲਾਈ ਲਾਈ ਆਠ ਅਗੇ ਕੀਤੀ ਸਾਡੇ ਉਹ ਇਹ ਮਜਬੂਰੀ ਸੀ ਉਹਦੀ ਇਹ ਕਬੂਲੀ ਸੀ ਚੱਲ ਐਡੀ ਠੱਗੀ ਜ਼ਰੂਰ है ਕੇ ਦੇ ਵਾਣੇ ਪ੍ਰਾਣੀ ਝੂਠ ਠਗੌਰੀ ਵਾਇਆ ਬੋ ਚਪ ਝੂਠ ਹੈ ਐ ਜੀ ਲੋ ਤੇਨ ਫਕੀਲਾ ਯਾਰ ਤੈਨੂੰ ਮਠਲਾਤਾ ਦੁਰ ਕਰਵਾਣ ਜਾਣੀ ਕਿ ਹੈ ਹਾਂ ਕਰਵਾਣ ਜਾਈ ਵੀ ਕਿ ਹੈ ਕਰਵਾਣ ਹੈ ਸਰਵਾ ਇਹ ਉਹ ਮਠਲਾਇਆ ਹਾਂ ਇਹ ਜਿਹੜੀ ਕੋੜੀ ਚੀਜ਼ ਆ ਮਿੱਠੀ ਲਾ ਦੇਣੀ ਟੇਸਟ ਬਦਲ ਦੇਣਾ ਜਾਣਦਾ ਵੀ ਹੈ ਬਿਲਕੁਲ ਜੋਗੀ ਕਾਹ ਰਹੇ ਨੇ ਜਿਹੜੀ ਕਬੀਲਦਾਰੀ ਹੈ ਸਤਾਂ ਜਨਮਾਂ ਦੇ ਪਾਪਾਂ ਦਾ ਬੋਲ ਹੈ ਇਹ ਇੱਥੇ ਦੀ ਉਪਦੇਸ਼ ਜੋਗੀ ਉਹਦਾ ਹੈ ਔਲਾਦ ਹੈਗੀ ਪਿਛਲੇ 7-4 ਦੇ ਪਾਪ ਕੀਤੇ ਨੇ ਤਾਂ ਔਲਾਦ ਪੈਦਾ ਹੋਈ ਹੈ ਤੁਹਾਡੇ ਤਾਂ ਹੀ ਉਹ ਵਿਆਹ ਤੋਂ ਭਜੇ ਸੀ ਜੋ ਇਹ ਪ੍ਰਚਾਰ ਜੋਗੀਆਂ ਦੀ ਚੁਰੀ ਹੈ ਇਹ ਗੁਰਬਾਨੀ ਨੇ ਇਸ ਪ੍ਰਚਾਰ ਨੂੰ ਹੋਰ ਤਰੀਕੇ ਨਾਲ ਬੋਲੇ। ਤਾਂ ਹੀ ਤਾਂ ਭਜੇ ਦੇ ਛੱਡ ਕੇ ਫਸੇ ਹੋ ਰਹੇ। ਉਹਨਾਂ ਆਰਮਾ ਪੈਦਾ ਕਰਿਓ, ਉਹ ਭੇਜੂਗਾ। ਉਹਦਾ શરીર ਨਾ ਵੀ ਭੇਜਦਾ ਆਪਣੇ ਤਾਂ ਹੁੰਦਾ ਨੇ ਹੋਰ ਕਿਹਾ। ਕਿਹਾ ਵੀ ਹੈ। ਪੁੱਤੀ ਗੱਡ ਪਵੈ ਕਿਸ ਸੰਸਾਰ ਦਾ ਜੋੜ ਵਾਲਾ ਬੋਹ ਹੈ ਜਿਹੜਾ ਪੁੱਤਰ ਗੱਡ ਪਾਉੜਾ ਹੈ ਇਹ ਗੱਡ ਖੋਲਣੀ ਬੜੀ ਔਖੀ ਹੈ ਸਿਫਤੀ ਗੱਡ ਭਵੇ ਦਰਵਾਰ ਇਹ ਗੱਲ ਗੁਰਬਾਣੀ ਦੇ ਵਿੱਚ ਇਹ ਸੰਸਾਰ ਦਾ ਤੁਹਾਨੂੰ ਭੱਜੜ ਵਾਸਤੇ ਦਿੱਤੇ ਰਿਹਾ ਸੰਸਾਰ ਨਾ ਬੰਦ ਕਰ ਖੜਵਾ ਤੇ اولاد ਦਿੱਤੀ ਏ ਤੁਹਾਨੂੰ। ਕੋਈ ਬੋ ਉਹ। ਉਹ ਬੰਦਣਾ। ਕਿ ਬੰਦਣਾ ਖੁੱਲਿਆ ਵੀ ਜਾ ਸਕਦਾ। ਉਹਨੇ ਹੋਰੇ ਨਾ ਕੋ ਜਤਾ। ਇਹ ਕੁਛ ਕਰਦਾ ਤੁਹਾਡੇ ਕਾਤਰ। ਜੇ ਅਸੀਂ ਇੰਨਾ ਕੋਦੇ ਵਾਸਤੇ ਕਰਤਾ ਫਿਰ ਕੀ ਹੋਗੇ? ਇਹ ਮਨ ਕਿਆ ਕਰੋ ਵੀ ਉਹਦਾ ਕਬਜ਼ੀ ਅਸੀਂ ਕੀ ਕਰਵਾਇਆ ਜਿਹੜਾ ਕੁਝ ਐਨਾ ਉਹਨੇ ਸਾਡੇ ਵਾਸਤੇ ਕੀਤਾ ਉਹ ਉਹਦੇ ਉਹਨੇ ਸਾਥੋਂ ਐਨਾ ਕੰਮ ਆਪਣਾ ਕਰਵਾਇਆ ਬਸ ਉਹ ਬੱਚੇ ਅਸੀਂ ਦੀ ਪੜ੍ਹੇ ਉਹਦੇ ਹੀ ਨੇ ਉਹਦੇ ਥੋੜਾ ਸਾਨੂੰ ਪੜ੍ਹਨੇ ਪਏ ਕਿਉਂਕਿ ਸਾਡੇ ਵਾਸਤੇ ਉਹਨੇ ਬਹੁਤ ਕੁਝ ਕੀਤਾ ਕਰਜ਼ਾ ਸਾਡਾ ਅਸੀਂ ਲਾਉਦੇ ਪਰ ਮੇਰੇ ਜਰ ਨਾਲ ਦੇ ਉਹਦਾ ਕਫਸੀ ਸਾਥੋਂ ਕਰਵਾਇਆ ਇੱਕ ਟਾਈਮ ਇੰਟਰਵਿਊ ਇਹਨਾਂ ਨੇ ਹੋਰ ਕਿਸੇ ਦਾ ਨਹੀਂ ਕਹਿੰਦਾ ਸਾਡੀ ਕਰ ਸੀ ਜਦੋਂ ਅਸੀਂ ਬੱਚਿਆਂ ਤੇ ਕਰਦੇ ਫਿਰ ਸਾਨੂੰ ਬੱਚਾ ਤੇ ਗੁੱਸਾ ਆਉਂਦਾ ਹੈ ਅਗੇਰਾ ਹੱਦ ਤੱਕ ਨਾ ਕੀਤਾ ਇਹ ਵੀ ਕਰਦੇ ਹੋਈ ਗਾਦੇ ਲੜਾਈ ਦਾ ਘਰ ਕਰ ਰਹੇ ਹਾਂ ਜਿਵੇਂ ਕਹਿੰਦਾ ਸੀ ਕੀਤਾ ਡਿਊਟੀ ਵੀ ਵਾਹ ਡਿਊਟੀ ਬਜਾਈਏ ਇਹ ਕੰਮ ਜੇ ਰਹਿਣਾ ਸੀਗਾ ਪਰ ਮੈਸਰ ਨੇ ਇਹਦੇ ਉਹਨੇ ਸਾਡੇ ਘਰ ਤੇ ਨੋਕੀ ਕੀਤਾ ਅਚੰਤ ਸੂਰ ਸਾਰੇ ਉਹਨੇ ਬਣਾਏ ਸੀ ਨਾ ਉਹਦਾ ਕੰਮ ਕੀਤਾ ਸੀ ਆਪਣਾ ਨਹੀਂ ਕੀਤਾ ਸਭ ਸਭ ਤੇਰੇ ਕੀ ਇਹ ਜੰਤਾ ਨਾ ਸਾਪਣੇ ਕੀ ਇਹਦਾ ਜੰਤਾ ਹੈ ਜੀ ਉਹਨੇ ਛੱਡਦੇ ਜੇ ਡਿਪੈਂਡੈਂਟ ਤੁਸੀਂ ਵੀ ਛੱਡ ਦਿਓ ਡਿਪੈਂਡੈਂਟ ਗੁਰੂ ਦੇ ਤੌਰ ਤੇ ਤੁਸੀਂ ਖਾਤੇ ਸਕਦੇ ਹੋ ਸਿਆਣੇ ਤੌਰ ਤੇ ਸਿੱਖਿਆ ਦੇ ਸਕਦੇ ਹੋ ਜੇ ਨਹੀਂ ਮੰਨਦੇ ਨਗਰ ਦਾਲਕਦੇ ਬੁੱਢੇ ਨਹੀਂ ਬੋਲ ਰਿਹਾ ਬੁੱਢਾ ਦਾਲਕ ਨੂੰ ਕੋਈ ਪ੍ਰੇਸ਼ਾਦੀ ਪਰੇਸ਼ਾਨੀ ਜਿਹੜੀ ਫਾਇਦਾ ਕਰਦੀ ਹੈ ਔਲਾਦ ਐਂ ਵੀ ਕਰਦੀ ਹੈ ਜੀ ਕਰਦੀ ਇਹ ਕਹਤੇ ਪ੍ਰੇਸ਼ਾਦੀ ਕਹਤੇ ਜਦੋਂ ਆਪਣੇ ਔਲਾਦ ਦੀ ਪ੍ਰੇਸ਼ਾਦੀ ਨਹੀਂ ਰਹੂਗੀ ਫਿਰ ਸੰਸਾਰ ਦੀ ਪਰੇਸ਼ਾਨੀ ਹਟੂਗੀ। ਹੂੰ। ਇਹ ਸੰਸਾਰ ਦੀ ਪਰੇਸ਼ਾਨੀ ਤਾਂ ਚਿਪੜੀ ਰਹੂਗੀ ਤੇ ਆਪਣੀ ਔਲਾਦ ਦੀ ਪਰੇਸ਼ਾਨੀ ਹੈ। ਫਿਰ ਉਹ ਤੋਂ ਕਹਾ ਉਹਦੀ ਔਲਾਦ ਦੀ ਪਰੇਸ਼ਾਨੀ ਉਹਦੇ ਰਿਸ਼ਤੇ ਦੀ ਪਰੇਸ਼ਾਨੀ ਹੋ ਜੋ ਤੇ ਚਲਦੀ ਹੈ ਘਟਾ ਕੇ ਖੁੱਲ ਜਾਂਦੀ ਹੈ। ਮੈਂ ਆਪਣੀ ਪਈ। ਬਸ ਅਧੂਗਾ ਦੀ ਪਰੇਸ਼ਾਨੀ ਉਹਨੇ ਜਿਹੜਾ ਰਾ ਚੁੜਨਾ ਹੈ ਖਵ라 ਕੁਦਰਤ ਨੇ ਕੀ ਕਰਨਾ ਕਿ ਉਹਦਾ ਚੁੜਿਆ ਹੈ ਇਹ ਸਾਨੂੰ ਕਿੱਥੇ ਸਾਨੂੰ ਆਪਣਾ ਨਹੀਂ ਪਤਾ ਮੈਂ ਆਪਣਾ ਵੀ ਕੰਟਰੋਲ ਨਹੀਂ ਕਰਦਾ ਕਿਉਂ ਅਧੂਗਾ ਦੀ ਪਰੇਸ਼ਾਨੀ ਕਰੀਏ ਉਹਨਾਂ ਨੂੰ ਉਹ ਦੇਖ ਅਸੀਂ ਦੇਖਾਂਗੇ ਪਿੱਛੇ ਕੀ ਹੋਇਆ ਹਰ ਨਾਗਰ ਦਾ ਕੌਣ ਪੈਦਾ ਹੋਇਆ ਪਗਤ ਪੈਦਾ ਹੋਇਆ ਹਰ ਨਾਲ ਭਗਤ ਤੋ ਦੁਖੀ ਹੈ ਕਾਲੂ ਨਾਲ ਰਖ ਤੋ ਦੁਖੀ ਹੈ ਸੋਲ ਖੜੀ ਬਾਤਾਂ ਨਾਲ ਵਰਕ ਤੋ ਦੁਖੀ ਹੈ ਮੇਰੇ ਘਰ ਵਾਲਾ ਭੈੜਾ ਦੁਨੀਆ ਚੰਗਾ ਸਮਝਦਿਓ ਭੈੜਾ ਸਮਝੀ ਸਹੀ ਗਾ ਆਪਣੀ ਆਪਣੀ ਸੋਚ ਹੈ ਮੁੱਢੇ ਨਾਲ ਤੋ ਦੁਖੀ ਨੇ ਤਦ ਆਪਨੀ ਠੀਕ ਨਾਲ ਕਿਹਦੇ ਸਤੋਂ ਦੁਖੀ ਜੀ ਨਾਲ ਜਣੀ ਦੁਖੀ ਕਿਸੇ ਤੋਂ ਕਿਹਨੇ ਦੁਖੀ ਸਾਰਾ ਨਾਨਕ ਤੋਂ ਦੁਖੀ ਹੈ ਨਾਲ ਕੀ ਨਹੀਂ ਦੁਖੀ ਹੈ ਇਹ ਨਾਲ ਨਹੀਂ ਦੁਖੀ ਬਾਕੀ ਥੋੜਾ ਥੋੜਾ ਜੈਰਾਉ ਵੀ ਦੁਖੀ ਹੈ ਬੇਵਾਂ ਲਾਇਆ ਸੀਗਾ ਦੇ ਸਦਾਰੀਏ ਇਹਦਾਂ ਵਰਤਣਾ ਸੀ ਇਹ ਬਹੁਤ بڑا ਅਫਸਰ ਹੁੰਦਾ ਹੈ ਹੁੰਦਾ ਆਪਣੀ ਸੋਚਦਾ ਸੀ ਉਹਦੀ ਆਪਣੀ ਸੋਚ ਸੀ ਉਹ ਉਸ ਪੋਸਟ ਬੜਾ ਵੱਡਾ ਸੀ ਉਹ ਕੀ ਪਤਾ ਸੀ ਰਾਨ ਕੀ ਹੋ ਕੇ ਰਕੜੂਗਾ ਉਹਦੀ ਆਪਣੀ ਸੋਚ ਸਾਰੀ ਸੋਚ ਸੀ ਨਾ ਬਿਲਕੁਲ ਜੇ ਧਾਨੂੰ ਆਪਣੀ ਔਲਾਦ ਨਾਲ ਲਗਾਵਾਂ ਸੋਚ ਹੈ ਫਿਰ ਅਸੀਂ ਭਾਗਸਾਤਰ ਡੁੱਬ ਗਏ ਲਗਾ ਰੋਬਲੂ ਡਬੂਗਾ ਤੂੰ ਤੈਨੂੰ ਡੁਬੋਗੇ ਜੇ ਕੁਝ ਵੀ ਫੜਿਆ ਹੋਇਆ ਤੁਹਾਡਾ ਤੁਸੀਂ ਤਰ ਨਹੀਂ ਸਕਦੇ ਉਹ ਡੁੱਬਣ ਵਾਲੀ ਕੀ ਹੈ ਤੂੰ ਡੁੱਬ ਜਾਊਗਾ ਛੱਡ ਕੇ ਰੱਖੋ ਸਭ ਕੁਝ ਸੌ ਵਿਲ ਨੇ ਆ ਦੇਖੋ ਕੀ ਬੁਤੀ ਹੈ ਲੱਲੇ ਲਾਇ ਤੰਦੇ ਜਿੰਨ ਛੋਡੀ ਮਿੱਤਾਂ ਆਪ ਤਾਂ ਦੇ ਲਾਗੇ ਸ੍ਰੀ ਸਿ ਛੱਡੀ ਆ ਤੁਸੀਂ ਕਿਉਂ ਫੜੀ ਹੋਈ ਆ ਬਾਲ ਕਹਿੰਦੇ ਛੱਡੀ ਹੋਈ ਐ ਡਿਫੈਂਡੈਂਟ ਅਸੀਂ ਕਿਉਂ ਫੜੀ ਹੋਈ ਆ ਸਾਨੂੰ ਕਾਦੇ ਚਿੰਤਾ ਨਸ਼ਾ ਖਾਂਦੇ ਪੰਜਾਬੀ ਫਰਾਂਡਾ ਸਾਡੇ ਟਿਪਕਾ ਖਾਂਦੇ ਸਾਨੂੰ ਕਾਦਾ ਵੇਦਰ ਕਿਉਂ ਵੇਦਰ ਜਿਹੜਾ ਕਰਨ ਵਾਲਾ ਕੰਮ ਛੁੱਟਿਆ ਹੋਇਆ ਇਹਨਾਂ ਨੂੰ ਅਸਰ ਚ ਇਹਨਾਂ ਨੂੰ ਕੰਮ ਕਰਨਾ ਹੀ ਨਹੀਂ ਜਿਹੜੇ ਉਹ ਕੰਮ ਨਾ ਉਹਨੂੰ ਹੀ ਫਿਕਰੇ ਕੇ ਜਦੋਂ ਉਹਨੇ ਕਿਹਾ ਉਹਨੇ ਤਾਂ ਕੋਈ ਗੱਲ ਨਹੀਂ ਜਾਨਦਾ ਸਭਨਾ ਆਪੋ ਆਪਣੀ ਮੈਂ ਆਪਣੀ ਬੇ ਆਪਣੀ ਬਸ ਜਿਹੜਾ ਜਿਹਦਾ ਟਾਰਗੇਟ ਇਹ ਹੈ ਉਹ ਕੁਝ ਕਰ ਲੂ ਜਿਹਦਾ ਟਾਰਗੇਟ ਇਹ ਨਹੀਂ ਹੈਗਾ ਉਹ ਇੱਥੇ ਫਸਿਆ ਰਹਿ ਜੂ ਰੌਲਾ ਜਿਆਦਾ ਪਾਊਗਾ ਕਰਨੋਂ ਨੇ ਕੱਖ ਨਹੀਂ ਕੋੜੋਂ ਤੇ ਕੱਖ ਨਹੀਂ ਕਿਉਂਕਿ ਆਪਣੇ ਹੱਥੀਂ ਆਪਣਾ ਆਪੇ ਕਾਸਵਾਰ ਹੋਣਾ ਕਿਸੇ ਦਾ ਨਾ ਤੂੰ ਸੁਵਾਰ ਸਕਦਾ ਨਾ ਬਿਗੜ ਸਕਦਾ ਇਹ ਅਸੀਂ ਕਹਿ ਸਕਦੇ ਵੀ ਪ੍ਰਚਾਰ ਗੁਰਮਤ ਦਾ ਇਹ ਕੋਈ ਬੰਦੋ ਕੋਈ ਦੋ ਬੰਦੂ ਬੰਦੋਣਾ ਵਾਸਤੇ ਸਾਨੂੰ ਸਾਨੂੰ ਪਰੇਸ਼ਾਨੀ ਹੋਣਾ ਚਾਹੀਦਾ ਵੀ ਕਿਉਂ ਨਹੀਂ ਬੰਦ ਸਿੱਖੇ ਗੱਲ ਦੀ ਬੰਦ ਨਾ ਮਰਨ ਪਰ ਕਬੂਲ ਕਬਰਚਾਰ ਦਾ ਠੀਕ ਹੋਵੇ ਇਹ ਕੋਈ ਪਰਿਸ਼ਾਦੀ ਨਹੀਂ ਸਾਡੇ ਅਕਾਲੀ ਬੰਦੇ ਕੌਣ ਬੰਦਾ ਕੋਈ ਨਹੀਂ ਬੰਦਾ ਬੁਟਨੜ ਵਾਲੇ ਹੋਰ ਦੁਨੀਆ ਦੇ ਬਥੇਰੇ ਨੇ ਤੁਸੀਂ ਪ੍ਰਚਾਰ ਦਾ ਠੀਕ ਕਰੋ ਕੋਈ ਜ਼ਰੂਰੀਏ ਸਿੱਖਾਂ ਜੇ ਬਣਨਗੇ ਮੁਸਲਮਾਨਾਂ ਚੋਂ ਨਹੀਂ ਆ ਕੇ ਬਣਿਆ ਇਹ ਦੂਆ ਜਾਣੀ ਮਹਾਰਾਸ਼ਟਰ ਦੇ ਕਿਹੜਾ ਸਿੱਖੇ ਸੀ ਜਿੱਥੋਂ ਭਗਤ ਪੈਦਾ ਹੋਏ ਨੇ ਦੋਈ ਢੀਕ ਚਾਹੀਦੀ ਏ ਰਾਸਤਾ ਸਹੀ ਹੋਣਾ ਚਾਹੀਦਾ ਪ੍ਰਚਾਰ ਸਹੀ ਕਰਨਾ ਸਿੱਖਾ ਦੀ ਜ਼ਿੰਮੇਵਾਰੀ ਸੀ ਤੁਸੀਂ ਕਰੋੜਾਂ ਰੁਪਏ ਦੇ ਬਜਟ ਦੇ ਵਿੱਚ ਪ੍ਰਚਾਰ ਕਿਉਂ ਨਹੀਂ ਸਹੀ ਕਰ ਰਹੇ ਪ੍ਰਚਾਰ ਸਹੀ ਕਰੋ ਇਹ ਰੜਾਇਆ ਸਾਡੀ ਪ੍ਰਚਾਰ ਸਹੀ ਹੋਣਾ ਚਾਹੀਦਾ ਗੱਲ ਵੈਸੇ ਸਹੀ ਜਾਣਾ ਚਾਹੀਦਾ ਗੁਰਬਣੀ ਦਾ ਬੰਨਾ ਨਾ ਬਰਲੇ ਕੋਈ ਬਦਲਣ ਦਾ ਨਹੀਂ ਕਰਵਾਉਗਾ ਇਹ ਨਹੀਂ ਬਰਨਾ ਨਾ ਬਰਲੇ ਔਰ ਬਨਰ ਨੂੰ ਬੜਾ ਸੌਖਾ ਵੀ ਹੈ ਇੱਕ ਉਹ ਵੀ ਕਹਿੰਦੇ ਨੇ ਬੜਾ ਔਖਾ ਹੈ ਇਹ ਜਿੱਦਾਂ ਕੁ ਵੀ ਕਾਮ ਕਰ ਗਲਤ ਰਸਤੇ ਜਾਂਦੇ ਮਾੜੇ ਮੋੜੇ ਭਜੜ ਤਾਂ ਸਹੀ ਰੋ ਜਿਹੜੇ ਹੋਰ ਆ ਜਿਹੜਾ ਪੈਦਾ ਹੋ ਗਏ ਸਾਡੇ ਕਦੋਂ ਪਹਿਲਾਂ ਹੋਇਨੇ ਸੱਸ ਸਾਲਾ ਜਿਹੜੇ ਲੜਾਈਆਂ ਪੜਾਈ ਹੋਰ ਸ਼ੁਰੂ ਹੋਈ ਹੋਈ ਉਹ ਸਿਰਫ ਸਾਨੂੰ ਗੁਰਮੰਤੇ ਅਗਿਆਨਤਾ ਹੈ ਤਾਜ਼ੀ ਲੜਾਈ ਦਾ ਵਾਲਾ ਰਾਜ ਜੁੜ ਲਿਆ ਉਹਦੇ ਨਾਲ ਲਾਹਨ ਕਰਨ ਤਾਂ ਚਰਚਾ ਨਾਮ ਦੀ ਕੀਤੀ ਹੈ ਨਾਲ ਦੀ ਚਰਚਾ ਉਹ ਕਹਿੰਦੇ ਨੇ ਸਾਨੂੰ ਤਾਂ ਵੈਲਕਮ ਕਰਨਾ ਚਾਹੀਦਾ ਚਰਚਾ ਤੁਸੀਂ ਕਰਦੇ ਬਹੁਤ ਵਧੀਆ ਗੱਲ ਹੈ ਆਪਾਂ ਬੈਠ ਕੇ ਕਰੀਏ ਨਾਲ ਦੀ ਚਰਚਾ ਉਹਨਾਂ ਦੀ ਸਾਕਤ ਵਿੱਚ ਬੈਠ ਕੇ ਕਰੀਏ ਨਾਲ ਦੀ ਚਰਚਾ ਤੁਸੀਂ ਹਟਾ ਰਹੇ ਹੋ ਨਾਲ ਦੀ ਚਰਚਾ ਤੁਸੀਂ ਇਹਦਾ ਨਾਰਗੋ ਦਾ ਬਰੋਦੀ ਹੋ ਸਿੱਧਾ ਨਾਲ ਕੀ ਕੀਤਾ ਸੀ ਸਦ ਗੋਸ਼ਟ ਚਰਚਾ ਇਹੋ ਹੋਰ ਕੀ ਕੀਤਾ ਸੀ ਚਾਚਾ ਹੀ ਆਓ ਉਹਨਾਂ ਦੇ ਵਿੜੇ ਵਿਟ ਕੇ ਕੀਤੀ ਉਹਨਾਂ ਦੇ ਵਿੜੇ ਵਿਟ ਕੇ ਕੀਤੀ ਤੁਸੀਂ ਉਹਨਾਂ ਦੇ ਘਰ ਜਾ ਕੇ ਕਰੋ ਨਾਮ ਚਾਚਾ ਉਹਨਾਂ ਦੀ ਪਬਲਿਕ ਨੂੰ ਜਾਗਰੂਕ ਕਰ ਦਿਓ ਵੀ ਨਾਵਾ ਹੁੰਦਾ ਸਾਬਤ ਕਰ ਤੁਸੀਂ ਸਾਬਤ ਕਰੋ ਵੀ ਇਹ ਪਾਸਾ ਲੈ ਆਪੇ ਬਾਤ ਕੱਢ ਜੂਗੀ ਪਰ ਬੰਨਾਂ ਨੂੰ ਪਰ ਨਾ ਉਹਨੂੰ ਪਤਾ ਹੈ ਨਾ ਇਹਨੂੰ ਪਤਾ ਲੜਾਈ ਹੋ ਰਹੀ ਸੀ ਅੱਸੀਏ ਬ੍ਰਿਟੇਨ ਨੇ ਉਹ ਦੂਜੀ ਤਰਫ ਨੂੰ ਨਾਮ ਦੇ ਨੀ ਜੇ ਤੁਸੀਂ ਕਾਬਲ ਕਾਬਸ ਸਿੱਖੋ ਤੁਸੀਂ ਇਹ ਗੋਫੀ ਨਾਲ ਚਰਚਾ ਹੋਣੀ ਚਾਹੀਦੀ ਹੈ ਆਓ ਕਰੀਏ ਆਪ ਬੈਠ ਕੇ ਪਰ ਕਰੇਗਾ ਇਹ ਵੀ ਕੋਰੇ ਉਹ ਵੀ ਕੋਰੇ ਪਰ ਇਹ ਵੀ ਨਹੀਂ ਜਾਂਦੇ ਵੀ ਇਹ ਸਭ ਤੋਂ ਜੇ ਅਸੀਂ ਸਿੱਖ ਲਈ ਇਹ ਆਪਣੀ ਕਮਜ਼ੋਰੀ ਲਗਾਉਂਦੇ ਨੇ ਨਾਮ ਦਾ ਸੰਭ ਨਹੀਂ ਪਤਾ ਇਹ ਆਪਣੀ ਕਮਜ਼ੋਰੀ ਲਗਾਉਂਦੇ ਨੇ ਆਵ ਨਾਮ ਤੋਂ ਦਿਵਾਲੀਏ ਨੇ ਪਤਾ ਹੋਰ ਹੋਏ ਦਿਵਾਲੀਏ ਨੇ ਨਾਮ ਚਰਚਾ ਲੰਬਾ ਜਿਵੇਂ ਨਹੀਂ ਰੱਖਿਆ ਹੋਇਆ ਅਗਲੇ ਨੇ ਨਾਮ ਚਰਚਾ ਬੜਾ ਸੋਚ ਸਮਝ ਕੇ ਰੱਖਿਆ ਹੈ ਬਲੋ ਉਹਨਾਂ ਜੀ ਵੀ ਸਾਰੇ ਲੋਕਾਂ ਦੇ ਉਹਨਾਂ ਨੇ ਚਰਚਾ ਰੱਖ ਲਿਆ ਨਾ ਉੱਤੇ ਚਰਚਾ ਤਾਂ ਵੀ ਚਰਚਾ ਬਰਮਾਤਰ ਅਨੁਸਾਰ ਚਰਚਾ ਨੂੰ ਕੋਈ ਕੋਡ ਨਹੀਂ ਕਹਿ ਸਕਦੀ ਲੋਕਾਂ ਹੋਸ ਨਹੀਂ ਰਹੇ ਚਰਚਾ ਲਾਉਂਦਾ ਸ਼ਬਦ ਵਿਚਾਰ ਕਰਨੀ ਵਿਚਾਰ ਗੁਰਮੰਡੀ ਜਗਾ ਜਗਾ ਹੀ ਚਰਚਾ ਕਰਨੀ ਤਾਂ ਕੋਬੜੀ ਗੱਲ ਨਹੀਂ ਜਿੱਤੇ ਸਾਨੂੰ ਤੁਹਾਨੂੰ ਸਵੇ ਨਾਲ ਉੱਤੇ ਕੀ ਹੁੰਦਾ ਚਾਚਾ ਹੀ ਹੁੰਦੀ ਔਰ ਕੀ ਹੁੰਦਾ ਇਸ ਗਲਤੀ ਕਹਿੰਦੇ ਨੇ ਅਸੀਂ ਹੋ ਲਈ ਤੇੜਾ ਇਹਦਾ ਮਤਲਬ ਸਿੱਖੇ ਨਹੀਂ ਹਣੇ ਸਿੱਖ ਬਣਦੇ ਨੇ ਆਪਣੇ ਆਪ ਨੂੰ ਸਿੱਖੀ ਤੋਂ ਕੋਰੇ ਸਿੱਖਦੇ ਸਿੱਖੀ ਦੀ ਸਮਝ ਤੋਂ ਕੋਰੇ ਸਿੱਖਦੇ ਕੀ ਸਿੱਖੀ ਦੀ ਸਮਝ ਤੋਂ ਕੋਰੇ ਸਿੱਖ ਸਿੱਖੀ नुकसान ਨੁਕਸਾਨ ਕਰਨ ਗਿਆ ਸਿੱਖੀ ਦਾ ਲਭ ਫਾਇਦਾ ਕਰਨ ਕੇ ਭਲਾ ਹੋ ਜੂ ਸਿੱਖੀ ਦਾ ਜਿਹੜਾ ਖੁਦੇ ਕੋਰੇ ਹੈ ਉਹ ਸਿੱਖੀ ਦਾ ਨੁਕਸਾਨ ਨੁਕਸਾਨ ਕਰ ਸਕਦਾ ਹੈ ਸਿੱਖੀ ਦਾ ਨਹੀਂ ਲਾਤ ਹੋ ਸਕਦਾ। ਤੁਪ ਚਰਚਾ ਕਰਨੀ ਚਾਹੀਦੀ ਹੈ। ਆਪੇ ਚ ਬੈਠੋ। ਕੋਈ ਨਾਮ ਉਹੀ ਗੁਰਬਾਨੀ ਸਾਡੀ ਹੈ ਉਹੀ ਹੋਣਾ ਠੀਕ ਹੈ। ਹੋ ਚਰਚਾ ਕਰੋ ਸਭ ਤੁਸੀਂ ਬੜੇ ਬੜੇ ਹੋਰ ਬਜ਼ੁਰਗਾਂ ਨੂੰ ਬੁਲਾਓ ਜੱਜਾਂ ਨੂੰ ਬੁਲਾਓ ਆਓ ਚਰਚਾ ਕਰੀਏ। ਅਗਲੇ ਕਹਣ ਵੀ ਤੁਸੀਂ ਫਰਾਡ ਕਰਦੇ ਹੋ। ਇਹ ਫਰਾਡ ਕਾਹਦੇ ਕਰਦੇ ਹੋ? ਜਾ ਚਾ ਕਰੋ ਦੋਏ ਗਲਤ ਸਬਦ ਹੋ ਜਾਣਗੇ ਦੋ ਉਹ ਹੋ ਜਿਹੜਾ ਗਲਤ ਆਪੇ ਸਬਦ ਕੋਈ ਗੁਰੂ ਰਹੇ ਕੁਛ ਵੀ ਨਾ ਕੋਈ ਸਤ ਰਹੇ ਸਭ ਸਮਾਪਤ ਹੋ ਜਾਣਗੇ ਸਾਰੇ ਸਿੱਖ ਵੱਟ ਜਾਣਗੇ ਹਲਤ ਹੈ ਆਉਂਦੇ ਕਿਉਂ ਨਹੀਂ ਹਲਤੇ ਹਲਤੇ ਤਾਂ ਨਹੀਂ ਆਉਂਦੇ ਆਪਣੀ ਆਪਣੀ ਸਰਦਾਰੀਆਂ ਖਤਮ ਹੁੰਦੀਆਂ ਨੇ ਆਪਣੇ ਆਪਣੇ ਡੇਰੇ ਬਣਾ ਬੈਠੇ ਨੇ ਝੂਠ ਬੋਲਿਆ ਸਾਰੇ ਖਤਮ ਹੁੰਦੇ ਨੇ ਆਪਣੇ ਆਪਣੇ ਚੌਧਰਾਂ ਸਭ ਦੀਆਂ ਆਜ਼ਾਦੀਆਂ ਉਹੜ ਕੇ ਮੇਂ ਨੀ ਪਾਰਲੀਮੈਂਟ ਬਣਾਈ ਬੈਠੇ ਨੇ ਆ ਆਪਣੀਆਂ ਬਣਾਈ ਬੈਠੇ ਨੇ ਲੋ ਜੀ ਡੇਰੇ ਬਣਾਈ ਬੈਠੇ ਨੇ ਜਿਹੜੇ ਬੁੱਢੀ ਪਾਰਲੀਮੈਂਟ ਵਾਲੇ ਤੋਂ ਵਧਰੇ ਕੋਈ ਨੂੰ ਤਾਂ ਗੁਰਦੁਆਰਾ ਪ੍ਰਬੰਧਕ ਦੀ ਉਹਨੇ ਤਾਂ ਆਪਣਾ ਰੋਜ਼ੀ ਇਹ ਜਿਆ ਰੱਖਿਆ ਹੋਇਆ ਉਹ ਸੈਡ ਧਰਮ ਪ੍ਰਚਾਰ ਉਹਨਾਂ ਦਾ ਵਿਸ਼ਾ ਹੀ ਨਹੀਂ ਹੈ ਉਹਦਾ ਗੋਲਕਾ ਦਾ ਪ੍ਰਬੰਧ ਕਰ ਰਹੇ ਫਿਰ ਉਹਦੇ ਹਾਂ ਗੋਲ ਕਦੇ ਖਰਚ ਕਰਦੀ ਹੈ ਉਹਨਾਂ ਦਾ ਮਤਲਬ ਐ ਨਹੀਂ ਕੋਈ ਹੈ ਜੇ ਤਰਫ ਪ੍ਰਚਾਰ ਦਾ ਫੰਡ ਗੁਰਮਖੋ ਨੂੰ ਦੇਣਾ ਚਾਹੀਦਾ ਆ ਜਿਹੜੀ ਬੋਟਾ ਨੇ ਇਹਦੇ ਨਾਲ ਸਿਰਫ ਜਿਹੜਾ ਦੂਆ ਪ੍ਰਬੰਧ ਹੈ ਬਾਯਾਲ ਕਿੱਥੇ ਖਰਚ ਕਰਦੀ ਹੈ ਉਹ ਵੀ ਗੁਰਮਖੋ ਦਾ ਸੁਲਕੇ ਖਰਚ ਕਰਦੀ ਹੈ ਗੁਰਮਖੋ ਦਾ ਸੁਲਕੇ ਖਰਚ ਕਰਦੀ ਹੈ ਕਿੱਥੇ ਕਰਦੀ ਹੈ ਹਿਸਾਬ ਗਿਲਾਬ ਰੱਖਣ ਵਾਲੀ ਹੈ ਕਮੇਟੀ ਸਰ ਯੋ ਬਿਹਸ ਹਸਾਬ ਰੱਖਣਾਂ ਨਾ ਉਹਦਾ ਹਿਸਾਬ ਰੱਖਾਇਆ ਜਾਂਦਾ ਵਸ ਉਹਦਾ ਹਿਸਾਬ ਰੱਖੜੇ ਬਾਕੀ ਸਾਰੇ ਸਿਆਣੇ ਬੈਠ ਕੇ ਉਹ ਕਾਲਰ ਵੀ ਇੱਥੇ ਖਰਚ ਕਰਨਾ ਚਾਹੀਦਾ ਤੇ ਨਹੀਂ ਚਾਹੀਦਾ ਯੋ ਬਜਟਾਂ ਦੇ ਵਿੱਚ ਉਹਦਾ ਗੁਰਮਤ ਹੈਗੀ ਸਾਡੇ ਕੋਲ ਇਹਨਾਂ ਦੇ ਤਾਂ ਬਜਟੇ ਮਨ ਮੁਖਾਣੇ ਨੇ ਬਣਾਏ ਜਿਵੇਂ ਗਵਰਨਮੈਂਟ ਦੇ ਬਜਟੇ ਹੋਏ ਨੇ ਪੈਸਾ ਹੋਵੇ ਗੁਰੂ ਘਰ ਦਾ ਗੁਰਬਾਨ ਦੂਰ ਤੋਂ ਪੁੱਛਿਆ ਹੋ ਜਾਵੇ ਕਿ ਖਰਚ ਕਰਦੇ ਇੱਕ ਤੇ ਲਗੇ ਸਰਕਾਰ ਜੇ ਮੈਂ ਮਰਜੀ ਖਰਚ ਕਰੇ ਸਾਨੂੰ ਕੀ ਲਗੇ ਉਹਦਾ ਪੈਸਾ ਗੁਰੂ ਦਾ ਪੈਸਾ ਗੁਰੂ ਦੀ ਮਰਜ਼ੀ ਤੋਂ ਖਰਚ ਹੋ ਸਕਦਾ ਕਿਉਂ ਖਰਚ ਹੋ ਗੁਰੂ ਦੀ ਮਰਜ਼ੀ तो ਮੇਨ ਗੁਰਬਤ ਦੇ ਗੁਰਬਤ ਦੀ ਜਿਹੜੀ ਸੋਝੀ ਹੈ ਗੁਰਬਤ ਦਾ ਜਿਹੜਾ ਇੱਕ ਕਿਵੇਂ ਇਹਦਾ ਪੈਸੇ ਸਾਰੀ ਵਰਲਡ ਚ ਪਹੁੰਚੇ ਸਾਰਾ ਬਜਟ ਇਸ ਤੇ ਲੱਗਣਾ ਚਾਹੀਦਾ ਸਾਰਾ ਬਜਟ ਜੀਰਨ ਨੂੰ ਪੜਾਉੜੇ ਉਹਦਾ ਖਰਚਾ ਵੀ ਡਾਲਾ ਚਾਹੀਦਾ ਕਿਤੇ ਪੈਸਾ ਨਾ ਲੈਣ ਕਿ ਕਦੀ ਕਿਤੇ ਲੋੜ ਹੋ ਗਏ ਉਹਨਾਂ ਨੂੰ ਉਹਦਾ ਖਰਚਾ ਗੁਰੂ ਘਰ ਤੋਂ ਚੱਲੇ ਚੱਲਦਾ ਸੀ ਅੱਗੇ ਰਾਗਿਆਂ ਦਾ ਚੱਲਦਾ ਸੀ ਰਾਗਿਆਂ ਦਾ ਬਾਗ ਦਿੱਤਾ ਹੋਇਆ ਸੀ ਖਾਜਾ ਗੁਰੂ ਘਰ ਦੁੱਧ ਸੀ ਕੋਈ ਪੈਸਾ ਹੋਰ ਕਿਤੋਂ ਲੈਣ ਦੀ ਲੋੜ ਨਹੀਂ ਆਦਮੀ ਤਾਹੀਦੀ ਪੈਸਾ ਲਓ ਜਿਹਦਾ ਗੁਰੂ ਘਰ ਖਾਚਾ ਚੱਲੂ ਚੱਕੂ ਗਾ ਫਿਰ ਸਤੋਖੀ ਆਦਮੀ ਛਾੜ ਕੇ ਕਾਬਲ ਜਿਹੜੇ ਨੇ ਪ੍ਰਚਾਰ ਦੇ ਉਹ ਹੋੜ ਗਈ ਕਾਬਲ ਵੱਡੂਏ ਕਾਬਲ ਇਹਨੂੰ ਬਾਣੀ ਨੂੰ ਸਮਝੇ ਨਹੀਂ ਉਹਦੀ ਦੂਜੇ ਜਿਹੜੇ ਪ੍ਰੋਫੈਸ਼ਨਲ ਨੇ ਉਹ ਤਾਂ ਆਪੇ ਭੱਜ ਜਾਣਗੇ ਪ੍ਰੋਫੈਸ਼ਨਲ ਨਾਲ ਤਾਂ ਰਹਿ ਹੀ ਨਹੀਂ ਸਕਦਾ ਗੁਰਬਾਣੀ ਜਿਹਦਾ ਪ੍ਰਚਾਰ ਕਰੇ ਨਹੀਂ ਸਕਦਾ ਉਹਦੇ ਸਭ ਚੌੜੀਓ ਨਹੀਂ ਪ੍ਰੋਫੈਸ਼ਨਲ ਦੇ ਜਿਹਦੇ ਸਮਝਾਉ ਉਹਨੇ ਬਾਇਆ ਦਾ ਰੜੜ ਨਹੀਂ ਬਾਇਆ ਦਾ ਰੰਗੋ ਤੇ ਰੜੜ ਨਹੀਂ ਫਿਰ ਬਿਰਮਾ ਕੇ ਬੋਤੀ ਬਲੇ ਬੋਗੇ ਬਲੇ ਰਪੀ